सफल दर्शन पेखित पुनीत पार्षद चरण गद निर्मल री सफल दर्शन देखत पुनीत देखत उपनीत वस्तु का दर्शन हम पुनीत वस्तु का पेखा दर्शन पुनीत वस्तु देखरा ये आखिरी दर्शन है ये सफल है तो बाद दर्शन कुछ ਸਰਸ਼ਨ ਸਤੋ ਪੁਣੇ ਦਾ ਜੋਤ ਉਹ ਦਿੱਕਤ ਦਾ ਗਿਆਨ ਦਿੱਕਤ ਦਾ ਗਿਆਨ ਗਿਆਨ ਨੂੰ ਬਾਰ ਬਾਰ ਜਪਾ ਬਾਰ ਬਾਰ ਸਮਝਣਾ ਬਾਰ ਬਾਰ ਕਿਸ ਜਿਹੜੀ ਵਸਤੂ ਦਾ ਗਿਆਨ ਜਿਹੜੀ ਵਸਤੂ ਦਾ ਗਿਆਨ ਹੈ ਉਹਨੂੰ ਬਾਰ-ਬਾਰ ਸਮਝਣਾ ਬਾਰ-ਬਾਰ ਸੁchnਾ ਬਾਰ-ਬਾਰ ਜੋ ਜਿਨਾ ਜਰੋ ਦਾ ਦਰਸ਼ਨ ਹੋ ਜਾਂਦਾ ਉਹਨੂੰ ਸਮਝੀ ਜਾਣਾ ਕਿ ਗੱਲ ਕੀ ਹੈ ਸਮਝ ਜਿਨਾ ਜਰ ਬੁਝਰ ਬੁਝਣ ਲੈ ਇਹ ਤੱਕ ਸਮਝਣਾ ਜਿਨਾ ਜਰ ਬੁਝੇ ਨਹੀਂ ਸਮਝੀ ਜਾਣਾ baar baar japna vaala bujhaar ta hai bujh nahi hai jinna je gal bujh nahi hove te vich bhavak ki hai gal ohna jare tu sachi daan karna baar baar jap jaalo bujhi gayi pher ਕਹਿੰਦਾ ਉਹਦੇ ਵਿੱਚ ਗਿਆਨ ਅਸਲ ਤੇ ਗਿਆਨ ਜਾਦੂ ਹੋਣਾ ਜਾਦੂ ਦਾ ਦਰਸ਼ਨ ਹੋ ਜਾਣਾ ਜਿਨਾ ਚਿਰ ਉਸ ਨੂੰ ਜਿਨੀ ਲਈ ਸਮਝ ਆਈ ਨਹੀਂ ਦਰ بار بار ਇਸ ਕਰਕੇ ਸਮਝਣਾ ਸਮਝੇ ਸਮਝਣ ਵਿੱਚ ਆਈ ਨਹੀਂ ਗਲ ਸਵਾਲ ਇੱਕ ਹੈਗਾ ਬੋਰਡ ਦਾ ਟੀਚਰ ਕੜਦਾ ਆਪਾਂ ਫੋਲੋ ਕਰੀ ਜਾਂਦੇ ਆ ਜੇਕਰ ਆਪ ਬੋਰਡ ਤੇ ਜਾ ਕੇ ਹੱਲ ਕਰਦਾਂਗੇ ਨਾ ਮਠੇ ਤੇ ਬਾਅਦ ਫਿਰ ਸੁਣ ਆ ਜਦੋਂ ਜਿਉ ਮਟੇਦੂ ਆਪਨੇ ਹਲ ਕਰ ਸਰਵੇ ਜਾ ਕੇ ਫਿਰ ਕੀ ਆ ਕੋਈ ਵਿਚਿਆ ਸਮਝ ਗੱਲ ਜਾਦਾ ਹੈ ਜਦ ਆਪ ਜਾ ਕੇ ਹਲ ਕਰ ਸਾਰੇ ਉਹ ਜੋਨਾ ਅੱਖਰ ਅੱਖਰ ਉਹ ਵੀ ਹੂੰ ਕਿਉਂਕਿ ਮੈਂ ਐਸੇ ਵੀ ਅੱਖਰ ਅੱਖਰ ਉਸੇ ਆਉਣੇ ਨੇ ਅੱਖਰ ਅੱਖਰ ਹੋਈ ਲਿਖਦੀਏ ਜਾ ਕੇ ਔਰ ਜਦ ਜਵਾਬ ਉਹ ਹੀ ਕੱਢ ਦिए ਫੇਰ ਸਭੇ ਜੋ ਫੇਰ ਖੌਲ ਗਾ ਆਹ ਉਹ ਨਾ ਜੇ ਨਾ ਜੇ ਕਿਤੇ ਨਾ ਕਿਤੇ ਗਲਤੀ ਪੈ ਜਾਂਦੀ ਹੈ ਉਹਨਾਂ ਜੇ ਫੇਰ ਦੁਬਾਰਾ ਸੁਣੋ ਫੇਰ ਦੁਬਾਰਾ ਸਮਝੋ ਕਰਤੀ ਕਿਉਂ ਕਹਦੀ ਕਿੱਥੇ ਕਹਿੰਦੀ ਬਾਰ ਬਾਰ ਬਾਰ ਪ੍ਰਭ ਇਹਦਾ ਹੀ ਬਣਾਦਾ ਬਾਰ ਬਾਰ ਜਪੋ ਜੀ ਮਹਾਪੁਰ ਸਾਡੇ ਵਾਸਤੇ ਲੇਖੋ ਬਾਰ ਬਾਰ ਸਾਡੇ ਵਾਸਤੇ ਲੇਖੋ ਕਿਉਂ ਜੇ ਬਾਰ ਬਾਰ ਉਹਨਾਂ ਕੋਲ ਜਵਾਬ ਦਿੱਤਾ ਉਹ ਜਵਾਬ ਇਹ ਹੈ ਕਿ ਜਿੰਨਾ ਚਿਰ ਪੂਰਾ ਬੁੱਝ ਨਹੀਂ ਲੈਂਦੇ ਸਾਰੀ ਗੱਲ ਨੂੰ ਇੱਕ ਤਾਂ ਹੈਗਾ ਨਸਲ ਕਰਦੀ ਕਿ ਇੱਥੇ ਇੱਥੇ ਐਸ ਨੰਬਰ ਤੇ ਕੀ ਆਇਆ ਹੈ ਐਸ ਨੰਬਰ ਤੇ ਪੰਜ ਆਇਆ ਹੈ ਐਸ ਨੰਬਰ ਤੇ ਚੌਕਾ ਆ ਤਾਂ ਉਹ ਗੱਲ ਲਿਖ ਦੇਣੀ ਸਮਝ ਕੇ ਬੁੱਝ ਵੀ ਉੱਤੇ ਜੋੜ ਦਿੱਤਾ ਕਿ ਐਸ ਤੀਆ ਤਾਂ ਆਇਆ ਜੋੜ ਕਾਲਣਾ ਜੋੜ ਕਰਕੇ ਦੇਖ ਕੇ ਇੱਥੇ ਦੁਆ ਉਹ ਇੱਥੇ ਆ ਉਹ ਸਭ বুঝ ਲੈਣਾ ਇੱਕ ਜਿਹੜਾ ਆਵੇ ਅੰਲੇ ਛੇਤੀ ਉੂ ਉਹ ਇਹਨਾਂ ਛੱਕਾ ਦੋਣ ਜਿਵੇਂ ਕੈਮਰਾ ਕਰਦਾ ਉਹ ਕੈਮਰਾ ਵਾਲਾ ਨਕਸ਼ਾ ਨਹੀਂ ਹੈਗਾ ਸਭ ਇਹ ਕਿ ਬੁੱਝਣ ਬੂਝ ਉਹਨੂੰ ਵਿਚਾਰਾ ਭਗਤਨ ਤਰ ਨਾਲ ਲੱਗਦੇ ਪਾ ਸਾਂਝ ਕੇ ਬੁੱਝਣ ਆਪ ਕਰਨਾ ਬੈਠਾ ਹਲ ਉਦੋਂ ਕਿਸੇ ਨਹੀਂ ਹੋਣਾ ਸਾਡੇ ਕੋਲ ਹੱਲ ਤੇ ਪ੍ਰਚਾਰ ਆ ਜਾਣਾ ਉਦੋਂ ਕੋਈ ਕਿਤਾਬ ਨਹੀਂ ਹੋਣੀ ਕੋਲ ਸਵਾਲ ਆ ਜਾਣਾ ਕੁਐਸਚਨ ਆ ਜਾਣਾ ਹਲ ਨੂੰ ਮਾਫ ਕਰਦੇ ਜਾਣਾ ਜੇ ਜਵਾਬ ਠੀਕਾ ਨੰਬਰ ਮਿਲ ਚੁ ਨਹੀਂ ਠੀਕ ਉਸ ਇਹ ਗੱਲ ਹੈ ਸ਼ਬਦ ਦਰਸ਼ਣ ਹੋ ਗਿਆ ਇਹ ਨਹੀਂ ਆਦਾ ਜਵਾਬ ਯਾਦ ਕਰ ਲੈ ਵੀ ਜਵਾਬ ਇਹਦਾ ਸਵਾਲ ਦਾ ਜਵਾਬ ਤਾਂ ਇੱਕ ਹੈ ਸਵਾਲ ਵੀ ਕਰ ਸਵਾਲ ਦਾ ਜਵਾਬ ਵੀ ਕਰ ਇੱਕ ਕੀ ਹੈ ਇਹ ਸਵਾਲ ਹੈ ਇੱਕ ਆਇਆ ਇਹ ਜਵਾਬ ਹੈ ਇੱਕ ਕੀ ਹੈ ਇਹ ਸਵਾਲ ਹੈ ਇੱਕ ਆਇਆ ਇਹ ਜਵਾਬ ਹੈ سوالوں دا جواب ایتھے سوالاں دا جواب اکو ہی ہے اک تو ثروف کرنا ہے یہ تسی قربانی ثابت کر دے کتیاں اک تو شروع میں قربانی پورا اک ਨਾ ਬੁਰਪਾ ਨਾ ਸੋ। ਉਹ ਵੀ ਤੇ ਤੇ। ਉਹ ਸਭ ਜਾ। ਸਵਨਾ ਜੀ ਆ ਦਾ ਇਕਤਦਾ ਹੈ ਜਿਹੜਾ। ਕਿਸ ਨੂੰ ਸਵਨਾ ਜੀ ਆ ਦਾ ਦਾਤਾ ਨਹੀਂ ਹੈ। ਆਦਮੀ ਆਦਮਾ ਦਾ ਦਾਤਾ ਉਹ ਜਿਹੜੇ ਉਹਦੇ ਰਾਜ ਨੇ ਉਹਨਾਂ ਦਾ। ਉਹਨਾਂ ਦਾ ਵੀ ਸਾਰਿਆਂ ਦਾ ਹੀ ਹੈ। ਉਹ ਮੰਨਦਾ ਹੋ ਲੋਕ ਮੰਨਦੇ ਹੋਣਗੇ। ਸਵਨਾ ਜੀ ਆ ਦਾ ਇਕਤਦਾ ਸੋ ਮੰਨਦੇ ਸਨ। ਉਹ ਇੱਕ ਈ ਗੱਲ ਐ ਉਹਦੇ ਸਾਰੇ ਆਗੇ ਸਿੱਧੂ ਆਂਦੇ ਨੇ ਵਿਸ਼ੂ ਉਹ ਸਮਾਂ ਤਮੰਤੇ ਇਸਾਈ ਤਮੰਤੇ ਕੋਹਾਂ ਦਾ ਵਿਦਾ ਤੋਹੀ ਹੈ ਜਾਨਵਰ ਤਮੰਤੇ ਹੀ ਉਹਨਾਂ ਦਾ ਵਿਦਾ ਤਮੰਤੇ ਸਵੇਰੇ ਉੱਠ ਕੇ ਜਾਨਵਰ ਦਾ ਕੋਈ ਨਹੀਂ ਜਾਂਦਾ ਖਾਦਰ ਬਾਰੇ ਮਾ ਸਾਡੇ ਤੋਂ ਜਮੂਦੀ ਦੇ ਦਰਸ਼ਣ ਕਰ ਕੋਹਾਂ ਦਾ ਵਿਦਾ ਤੋਹੀ ਇਸ ਕਰਕੇ ਇੱਕ ਦਾ ਇੱਕ ਨੂੰ ਜਿਖ ਕੀ ਹੈ ਇਹਦਾ ਦਰਸਾਨ है ਗੁਰਬਾਨੀ ਨੇ है, है। बार ਹੈ ਉਹ ਗਿਆਨ बार ਇਹਦਾ ਕਿ ਬਾਰ ਬਾਰ ਸਮਝ ਕੇ ਬਾਰ ਬਾਰ ਸਮਝ ਕੇ 부ਝ ਕੇ ਫਿਰ ਸਾਨੂੰ ਵਧਰ ਗਣੇ ਦਿੱਤੀ ਜਦੋਂ ਇੱਕ ਅਸੀਂ ਸਮਝ ਲਿਆ ਉਹ ਹੈਗਾ ਦਰਸਾਨ ਪੁਰੀਤ ਦਰਸ਼ਨ ਅੱਖਾਂ ਨਾਲ ਨੀ ਹੁੰਦਾ ਸਫਲ ਦਰਸ਼ਨ ਆਹ ਸਫਲ ਦਰਸ਼ਨ ਅੱਖਾਂ ਨਾਲ ਨਹੀਂ ਹੁੰਦਾ ਪੁਰੀਤ ਵਸੂ ਦਾ ਦਰਸ਼ਨ ਹੈ ਪੁਰੀਤ ਵਸੂ ਦਾ ਦਰਸ਼ਨ ਇੱਕ ਪੁਰੀਤ ਵਸੂ ਹੈ ਜੋ ਸਾਬਤ ਤੋਂ ਹੁੰਦਾ ਪੁਰੀਤ ਮਾਇਆ ਦੇ ਇਲੱਤ ਨਹੀਂ ਹੁੰਦਾ ਆਦਾਨ ਨਹੀਂ ਹੁੰਦਾ ਪਰਮਾਨੰਸ ਨਹੀਂ ਹੁੰਦਾ ਉਗਰਾਨਸ ਨਹੀਂ ਹੈ ਉਪਜੀਤ ਸਭਲ ਦਰਸ਼ਨ ਤੇਖਤ ਪਨੀਤ ਵਰਸ਼ਤ ਚਰਨ ਗਤ ਨਿਰਮਲ ਰੀਤ ਜਦੋਂ ਦਰਸ਼ਨ ਸਫਲ ਹੋ ਜਾਂਦਾ ਦਰਸ਼ਨ ਕਰ ਉਤੇ ਕਾਬਲ ਹੋ ਸਭ ਜੀ ਗੁਰਦੀ ਸਭ ਜੀ ਹੁੰਦੇ ਫਿਰ ਕੀ ਦੇਖਦੀ ਹੈ ਤੇਖਤ ਪੁਤੀ ਫਿਰ ਜੋਤ ਦੇਖਦੀ ਹੈ ਸਰੀਰ ਚ ਸਰੀਰ ਨਹੀਂ ਦੇਖਦੀ ਪਾਇਆ ਨਹੀਂ ਦੇਖਦੀ रूप रंग ਨੀ ਦੇਖਦੀ रेखा भेद नहीं देखती वो ज्योत बुद्ध देखदी है जहां ज्योत निरपुछो जहां पूछो कर ये, ये सफल दर्शन ये दर्शन करना है असि इत्थे होना है पर असि माया दी ਸਬਰ ਦਰਸ਼ਨ ਤੇਗਤ ਨੀਤ ਨੀਤ ਪਰਸਤ ਚਰਨ ਗਤੀ ਨਿਰਮਲ ਰਹੀਤ ਹਾਂ ਪਰਸਤ ਪਰਸਤ ਕਰਨ ਸਿੱਖੀਏ ਬੁਧਨੀ ਦਾ ਦਰਸ਼ਨ ਉਹਦੇ ਜਿਹੜੇ ਗੁਣ ਨੇ ਉਹਨਾਂ ਦਾ ਸਪਸ਼ਟ ਕਰਨਾ ਗੁਣ ਦਾ ਅਰਥ ਕਰਨਾ ਪਰਸਤ ਚਰਨ ਗਤੀ ਨਿਰਮਲ ਰਹੀਤ ਗਤੀ ਉਹਦੇ ਗੁਣਾਂ ਨੂੰ ਧਾਰਨ ਕਰਨ ਨਾਲ ਗੁਤੀ ਉੱਤੇ ਵਸੀਏ ਜਦੋਂ ਕੋਈ ਗੁਰਮਖਰ ਨੂੰ ਸਮਝ ਲਈਏ ਅਸੀਂ ਗੱਲ ਇਹ ਹੈ ਜਿੱਦ ਹੀ ਗੱਲ ਉੱਥੋਂ ਮੇਰੀ ਗੱਲ ਚੱਲੀ ਹੋਈ ਜੀ ਸੱਤ ਪੁਰਖ ਜੇ ਨਾ ਜੀ ਸੱਤ ਗੁਰ ਤੇ ਉਸ ਕਾ ਉਸ ਆਦਮੀ ਦੀ ਗੱਲ ਹੈ ਉਸ ਆਦਮੀ ਦੀ ਗੱਲ ਹੈ ਜੀਨੇ ਉਸ ਆਦਮੀ ਨੂੰ ਸਮਝ ਲਿਆ ਉਹਦੀ ਜੋਤ ਜਾਣ ਲਈ ਉਹਦਾ ਦਰਸ਼ਨ ਸਬਰੂ ਹੋ ਗਿਆ ਸਰੀਰ ਕਰਕੇ ਇਹਦੀ ਦਰਸ਼ਨ ਕਰਦਾ ਉਹਦਾ ਨਿਰੇ ਕਰਕੇ ਦਰਸ਼ਨ ਕਰਨਾ ਬੁੱਧ ਦਾ ਦਰਸ਼ਨ ਕਰਨਾ ਜੇ ਬੁੱਧ ਸਮਝ ਲਈ ਜਿਵੇਂ ਗੁਰੂ ਘਰ ਦੇ ਵਿੱਚ ਜਿਹੜੇ ਗੁਰੂ ਨਾਲ ਜੁੜ ਗਏ ਉਹ ਫਿਰ ਦੂਜੇ ਗੁਰੂ ਤੇ ਮੁੜਿਆ ਨਾ ਜੁੜੇ ਦੁਨੀਆਂ 'ਚ ਉਹ ਲਾੜੀ ਹੋਰ ਜਿਹੜੇ ਗੁਰੂ ਘਰ ਨਾਲ ਜੁੜੇ ਰਹੇ ਕੋਹਾਂ ਨੇ ਸਫਲ ਉਹਦਾ ਦਰਸ਼ਨ ਸਫਲ ਸੀ ਉਹਨਾਂ ਨੂੰ ਸਮਝ ਆ ਗਈ ਸੀ ਕਿ ਸੱਚ ਕੀ ਹੈ ਝੂਠ ਕੀ ਹੈ ਉਹ ਜੂੜ ਜੋ ਵੀ ਕੁਸ਼ਾਲ ਰਾਜ ਜੂੜ ਵਾਲ ਨਹੀਂ ਗਏ ਸੱਚ ਵਾਲੇ ਖੜੇ ਰਹੇ ਆ ਗੱਲ ਹੈ ਸਰਦਾਰ ਜੀ ਜਿਹੜੇ ਦਾ ਖੜੇ ਨੇ ਪੰਜਵੇਂ ਪਾਸਾ ਨਾਲ ਉਹਨਾਂ ਦਾ ਦਰਸ਼ਨ ਤਾਂ ਸਫਲ ਹੈ ਇਹਦੇ ਘਰ ਦਾ ਮੈਟਰ ਜਾਦਾ ਹੈ ਇਸ ਹੈ ਦੇ ਵਿੱਚ ਬਾਣੀ ਚ ਗੱਲਾਂ ਗੁਰਬਾਣੀ ਵੀ ਹੈ ਪ੍ਰੈਕਟੀਕਲ ਵੀ ਹੈ ਦੇ ਵਿੱਚ ਪਰ ਪ੍ਰੈਕਟੀਕਲ ਉਸ ਵੇਲੇ ਇੱਕ ਵੇਚੀ ਸੀ ਉਸ ਵੇਲੇ ਉਸ ਵੇੜੇ ਦੀ ਗੱਲ ਵੀ ਆ ਕਿਉਂਕਿ ਜੋ ਕਹਿ ਰਹੇ ਨੇ ਉਹ ਦੇਖ ਰਹੇ ਨੇ ਜੋ ਦੇਖ ਰਹੇ ਨੇ ਉਹਦੇ ਵਿੱਚੋਂ ਦੱਸ ਰਹੇ ਨੇ ਇਹ ਉਹਦਾ ਸੱਚ ਉਹਦਾ ਸੱਚ ਲੋਕਾਂ ਨੇ ਇਹ ਸਮਝ ਲਿਆ ਸੀ ਵੀ ਮੈਂ ਜਿਹੜਾ ਹੈਗਾ ਬਲਮਾਨ ਦਾ ਲੈਣ ਆਇਕ ਨੇ ਉਹ ਲੜਨੇ ਨਾਲ ਜੁੜੇ, ਜੀਆਂ ਨਾਲ ਕੁਰਬਾਨੀ ਨਾਲ ਜੁੜੇ ਨੇ, ਲੈਣੇ ਨੇ ਇਸ ਕਰਕੇ ਲੈਣੇ ਨਾਲ ਜੁੜੇ ਨੇ ਕਿ ਉਹ ਗੁਰੂ ਨਾਲ ਜੁੜਦਾ, ਪਰਮੇਸ਼ਰ ਨਾਲ ਜੁੜਦਾ, ਆਪਣੇ ਨਾਲ ਜੁੜਦਾ। ਸ੍ਰੀ ਕਹਿੰਦਾ ਆਪਣੇ ਨਾਲ ਜੁੜਦਾ। ਪਰਮੇਸ਼ਰ ਨਾਲ ਵੀ ਜੁੜਦਾ। ਸ੍ਰੀ ਕਹਿੰਦਾ ਆਪ ਗੁਰੂ ਨਾਲ, ਆਪ ਦਾਸ। ਸ੍ਰੀ ਕਹਿੰਦਾ ਆਪ ਗੁਰੂ ਨਾਲ, ਆਪ ਦਾਸ। ਆਪ ਇਹ ਐਵੇਂ ਹੀ ਆਈ ਗੱਲ ਤਨੋਂ ਤਾਂ ਪੀੜ੍ਹੀਆਂ ਦੇ ਵਿੱਚ ਘਰਦਿਆਂ ਨੂੰ ਵਧੀ ਮਿਲੀ ਹੋਈ ਬਲਕੇ ਚਾਹ ਨੂੰ ਮਿਲੀ ਤੇ ਉੱਥੇ ਰਾਮਦਾਸ ਨੂੰ ਵੀ ਕਦੀੋਂ ਪਾਸੇ ਮਿਲੀ ਉੱਤੇ ਨੇ ਹੋਈਆਂ ਗੁਰਾਂ ਅੰਕ ਦੇ ਬਾਅਦ ਤੱਕ ਤੇ ਨਹੀਂ ਹੋ ਜਦੋਂ ਲੈਣਾ ਜੀ ਰਾਮਦਾਸ ਦੀ ਰਾਮਦਾਸ ਨੇ ਤਾਂ ਪੀੜ੍ਹੀਆਂ ਨੂੰ ਵਧੀ ਦਾ ਘਰ ਬਣਿਜੀ ਨਾਨਕ ਦੀ ਗੱਦੀ ਤੇ ਚਲਦੀ ਹੋਈ ਹੈ ਕਿਤਨਾ ਜਗ੍ਹਾ ਦਿੱਤੀ ਆਪਨੇ ਬੀ ਕਰ ਨਹੀਂ ਬੜੀ ਚੌਥੀ ਜਗ੍ਹਾ ਆ ਕੇ ਕੀਤੀ ਕਰ ਰਹੀ ਉਹ ਦੋ ਬੜੇ ਭਾਈ ਨੇ ਜਿਹੜੇ ਉਹ ਕਹਿੰਦੇ ਅਸੀਂ ਹਸਰਾਰ ਇੱਥੇ ਇਹ ਔਲਾਦ ਕਰਕੇ ਉੱਥੇ ਘਰਦਿਆਂ ਦੀ ਗੱਲ ਸੀ ਅਸੀਂ ਬਾਹਰ ਖਾਂ ਇੱਥੇ ਆ ਵੀ ਅਸੀਂ ਇਸ ਕਰਕੇ ਬਾਹਰ ਖਾਂ ਸੀ ਹਾਂ ਔਰ ਉਹਨਾਂ ਨੇ ਆਹ ਸ਼ਰਤ ਨਹੀਂ ਸੀ ਪੂਰੀ ਕੀਤੀ ਕਿਸਾਨੀ ਗੁਰੇ ਦੀ ਸਭਾ ਦਰਸ਼ਨ ਤੇ ਦੇਖਤ ਤਰੀਕ ਉਹਨਾਂ ਨੇ ਖੁਦ ਵੀ ਨਹੀਂ ਕੀਤਾ ਵਾਹਦਾਇਬ ਨੇ ਯਾਰ ਕਿ ਕਿੰਨੇ ਫਿਰ ਜੇ ਇਹ ਦਰਸ਼ਨ ਨਹੀਂ ਸੀ ਕੀਤਾ ਪੰਜਵੇਂ ਪਾਸ਼ਾ ਨੇ ਦਰਸ਼ਨ ਕਰਦੇ ਉੱਥੋਂ ਵੱਡੀ ਆਈ ਤਾਂ ਆਈ ਉਹ ਜਿਹੜਾ ਢਣਾ ਵਾਂ ਉਹ ਉਹੋ ਸੀ ਜਿਹੇ ਜਿਹੇ ਕਿਸ਼ਿਆਰ ਵਾਹਦੇ ਨੇ ਮਾਦੇ ਦੀ ਬੋਧੇ ਗੱਲ ਨਹੀਂ ਆਉਂਦੀ ਡਿਊਟ ਹੋ ਗਿਆ ਜੀ ਉਹ ਤਾਂ ਪਰ ਪ੍ਰਤੀਸ਼ੀ ਦੀ ਗੱਲ ਹੁੰਦੀ ਉਹ ਤਾਂ ਬਰੋਧ ਪ੍ਰਤੀਸ਼ੀ ਆ ਕਰਦਾ ਰਹੇ ਮਾਦੇ ਬੋਧ ਨੂੰ ਕਹਿੰਦੇ ਹੁਸਨਤ ਦੇਸੀ ਇਸ ਕਰਕੇ ਉਹ ਜੋ ਆਦਮੀ ਜਿਹੜਾ ਆਦਮੀ ਜੋਤ ਨੂੰ ਹੈ ਦੇਖ ਸਕਦਾ ਜੋਤ ਨੂੰ ਫੇ ਸਮਝ ਸਕਦਾ ਉਹ ਤੁਹਾਡਾ ਮਾਇਆ ਵਾਲਾ ਮਾਨ ਕਿੰਧਰ ਆਜੀ ਜਿਆਦਾ ਨਹੀਂ ਆਕਾ ਰੂਹ ਕੀ ਗੈਰਤ ਨਹੀਂ ਭਾਈ ਬੜਾ ਹੈ ਪੜ੍ਹਾਈ ਚਾਹੀਦੀ ਗੱਲਾਂ ਜਿਹੜੀਆਂ ਉਹ ਕਰਦੇ ਨੇ ਉਹਦੀ ਸਮਝ ਕੋਈ ਨਹੀਂ ਕਿਸੇ ਦੀ ਗੁਰੂ ਗਿਆਨ ਦਾ ਗੁਰਮਤਿ ਦੀ ਸਮਝ ਕੋਈ ਨਹੀਂ ਉਹਨਾਂ ਲੋਕਾਂ ਨੂੰ ਕਹੋ ਤਾਂ ਸੰਤਨ ਰੋਜੀ ਇਹ ਵੀ ਗੁਰਮਤਿ ਉਹ ਕਹਿੰਦਾ ਨਾ ਗੁਰੂ ਰਸਾ ਦਾ ਪ੍ਰਕਾਸ਼ ਹੁੰਦਾ ਆ ਆਦਮੀ ਨੇ ਕਹਿੰਦਾ ਉਹਨਾਂ ਮੁਖੀ ਬੰਦਾ ਵੀ ਕਹਿੰਦੇ ਜੀ ਗੁਰਮਤਿ ਦੇ ਖਿਲਾਫ ਕਹਿੰਦੇ ਇਹ ਇਹ ਲੋਕ ਜੱਤੀ ਉਹੀ ਹੋਵੇਗਾ ਜੇ ਉਹ ਗੁਰਬਾਨੀ ਨੂੰ ਨਿਆਣਾ ਕਰਦੇ ਆਪ ਵੀ ਕਹਿੰਦੇ ਲੋਕੀ ਅਸੀਂ ਵੀ ਗੁਰਬਾਨੀ ਦਾ ਪ੍ਰਚਾਰ ਕਰਦੇ ਕੋਗਾ ਆਂ ਲੋਕ ਲੋਕਾਂ ਨੂੰ ਕੀਪਾ ਗੁਰਬਾਨੀ ਦਾ ਪ੍ਰਚਾਰ ਕਰਦੇ ਨਾ ਪਰ ਬੰਦ ਉਹਦੇ ਰਸਤੇ ਕੁਝ ਹੋਰ ਪ੍ਰਚਾਰ ਕਰਦੇ ਇਹਨਾਂ ਦਾ ਆਪਸ ਵਿੱਚ ਕੀ ਵਤ ਪੈ ਦੇਖਿਓ ਇੱਕ ਪਲੈਟਫਾਰਮ ਤੇ ਕਿਉਂਦੀ ਸਾਰੇ ਪ੍ਰਚਾਰ ਕਰਦੇ ਪਲੈਟਫਾਰਮ ਤੇ ਕਿਉਂਦੀ ਕਰਦੇ ਕਿ ਜਦੋਂ ਤਾਂ ਕਾ ਕਰਦੇ ਸਵਾਰਤੀ ਨਾ ਹੁੰਦੇ ਹਾਏ ਦਾ ਸਵਾਰਤੀ ਗੱਲ ਸਵਾਰਤ ਇਕੱਠਾ ਨਹੀਂ ਹੁੰਦਾ ਪਰਵਾਸ ਇਕੱਠਾ ਹੁੰਦਾ ਗੁਰੂ ਗ੍ਰੰਥ ਸਾਹਿਬਾਰੇ ਬੈਠੇ ਨੇ ਉਹ ਇੱਕ ਜਗ੍ਹਾ ਬੈਠ ਕੇ ਸੰਤ ਸੁਖਾਣ ਸਫਲ ਦਰਸ਼ਨ ਪਨੀਤ ਚਰਨ ਗਤੀ ਨਿਰਮਲ ਸਫਲ ਦਰਸ਼ਨ ਉਹਦਾ ਜੋ ਪਰੀਤ ਵਸੂ ਨੂੰ ਤੋਂ ਬਿੱਤਰ ਬਦਤਰ ਪਰੀਤ ਵਸੂ ਨੂੰ ਦੇਖਦੇ ਅੱਖਾਂ ਨਾਲ ਨਹੀਂ ਦੇਖੀ ਜਾ ਸਕੀ ਇਹ ਅੱਖਾਂ ਵਾਜੋ ਵਿਖੇ ਅੱਖਾਂ ਨਾਲ ਬਿਨਾਂ ਦੇਖਣ ਦੀ ਗੱਲ ਦਾ ਦਰਸ਼ਨ ਹੁੰਦਾ ਹੀ ਬਿਨਾਂ ਅੱਖਾਂ ਤੋਂ ਹੈ ਦਰਸ਼ਨ ਦਾ ਮਤਲਬ ਅੱਖਾਂ ਤੋਂ ਬਿਨਾਂ ਦੇਖਣਾ ਜੇ ਤੁਸੀਂ ਪੜਦੇ ਆ ਇਹਨਾਂ ਨੂੰ ਵਿਸ਼ਾਸ ਕਰਦੇ ਛੇ ਉਹਨਾਂ ਨੂੰ ਦਰਸ਼ਨ ਕਿਹਾ ਹੈ ਦੇਖਦੇ ਆ ਅੱਖਰ ਸਮਝਣਾ ਗਿਆ ਕੀ ਲਿਖਿਆ ਆ ਜੀ ਉਹ ਫਿਰ ਅੱਖਾਂ ਨਾਲ ਅੱਖਾਂ ਦਾ ਅੱਖਰ ਪੜੇ ਉਹਨੇ ਬਿਚੋ ਕੇ ਸਮਝਿਆ ਉਹ ਕਿਨੇ ਸਮਝੇ ਉਹ ਅਕਲ ਨਾਲ ਸਮਝੇ ਅਕਲ ਨਾਲ ਦਰਸ਼ਨ ਹੁੰਦੇ ਹੁੰਦੇ ਨੇ ਅੱਖਾਂ ਨਾਲ ਨਹੀਂ ਹੁੰਦੇ ਹੁੰਦੇ ਇਹਨਾਂ ਨੇ ਅੱਖਾਂ ਨੂੰ ਦਰਸ਼ਨ ਅੱਖਾਂ ਨਾਲ ਦਰਸ਼ਨ ਬਣਾਤਾ ਸਾਰਿਆਂ ਨੇ ਜਿਨ੍ਹਾਂ ਲੋਕਾਂ ਨੇ ਅੱਖਾਂ ਵਾਲੇ ਦਰਸ਼ਨ ਪ੍ਰਚਾਰ ਕੀਤੇ ਨੇ ਉਹ ਗੁਰਬਾਣੀ ਨੂੰ ਤੋੜਦੇ ਨੇ ਗੁਰਬਾਣੀ ਨਾਲ ਜੋੜਦੇ ਨੇ ਗੁਰਬਾਣੀ ਨਾਲ ਜੋੜ। ਆਪਣੇ ਨਾਲ ਜੋੜ ਲੈ। ਲੋ ਜੀ ਹੁਣ ਤੁਸੀਂ ਸੰਤਾਂ ਦੇ ਦਰਸ਼ਨ ਕਰ ਲੋ। ਲੋ। ਥੋੜਾ ਸੰਤ ਤੇਰੀ ਦੇਹ ਹੈ ਤੇ ਸੰਤ ਤੇਰੀ ਆਤਮਾ। ਜੇ ਤਾਂ ਆਤਮਾ ਨੂੰ ਸ਼ਾਂਤੀ ਮਿਲੀ ਹੈ। ਤੇ ਤਾਂ ਆਤਮਾ ਦਾ ਦਰਸ਼ਨ ਹੋਊਗਾ, ਉਪਰਿ ਦੇ ਦਰਸ਼ਨ। ਜੇ ਸਰੀਰ ਨੂੰ ਸ਼ਾਂਤੀ ਮਿਲੀ ਹੈ। ਫਿਰ ਆਤਮਾ ਨੂੰ ਵੀ ਮਿਲੀ। ਉਹਨਾਂ ਦਾ ਇਹ ਨਹੀਂ ਬਿਕਾਉ ਸੀ ਦਰਸ਼ਨ ਕਰਕੇ ਫਸੇ ਜਿਹੜੀ ਬੁਧੀ ਕਰਾਂ ਸਫਲ ਦਰਸ਼ਨ ਜੋ ਪਵਿੱਤ੍ਰ ਵਸੂ ਨੂੰ ਦੇਖਦਾ ਦਰਸ਼ਨ ਕਰਨ ਚ ਸਫਲ ਹੋਇਆ ਨਹੀਂ ਕੋਈ ਸਫਲ ਹੋਇਆ ਹੀ ਨਹੀਂ ਜਿਹੜਾ ਦਰਸ਼ਨ ਸਫਲ ਹੈ ਜਿਹੜਾ ਦਰਸ਼ਨ ਪ੍ਰਮਾਣ ਸੱਜਖੰਡ ਚ ਉਹ ਅੱਖਾਂ ਨਾਲ ਨਹੀਂ ਆਏਗਾ ਬਿਨਾਂ ਅੱਖਾਂ ਤੋਂ ਉਪਰੀਤ ਵਸੂਲਾ ਦਰਸ਼ਨ ਹੈ ਉਹ ਆਤਮਾ ਦਾ ਦਰਸ਼ਨ ਹੈ ਸੇਖਤ ਪੁਰੀਤ ਹਾਂਜੀ ਪਰਸਤ ਚਰਨ ਗਤੀ ਨਿਰਮਲ ਰੇਖ ਫਿਰ ਕੀ ਹੈ ਜੀਨਾਂ ਨੇ ਗੁਰ ਅਰਜਨ ਦੇਵ ਨੂੰ ਪਰਸਲੇ ਆਜ ਸਮਝ ਲਿਆ ਦਰਸ਼ਨ ਕਰ ਲਿਆ ਆਤਮਕ ਲੈਵਲ ਤੇ ਪਰਸਤ ਚਰਨ ਉਹਨਾਂ ਨੇ ਉਹਨਾਂ ਦਾ ਜਿਹੜੀ ਕੁਟ ਪ੍ਰਿੰਸ ਜਿਵੇਂ ਉਹ ਚੱਲੇ ਨੇ ਉਹ ਗੁਰ ਚਾਲੀ ਚੱਲ ਪਏ ਚਲੋ ਗੁਰ ਚਾਲੀ ਗੁਰ ਵਾਲੀ ਚਾਲ ਚੱਲਾਂ ਗੁਰ ਵਾਲੇ ਗੁਣ ਹਰ ਧਾਰਨ ਕਰਨਾ ਉਹ ਗੁਰਤਾ ਹੁਜੀਤਰ ਜਿਨ੍ਹਾਂ ਨੂੰ ਵਰਸਿਆ ਗੁਣਾਂ ਨੂੰ ਵਰਸਿਆ ਗੁਣ ਦੇਖੇ ਨਾ ਉਹਨਾਂ ਨੇ ਸਰੀਰ ਨਹੀਂ ਦੇਖਿਆ ਉਹ ਗੁਣ ਨਹੀਂ ਸੀ ਪਰਤੀਏ ਉਹ ਗੁਣ ਨਹੀਂ ਸੀ ਮਹਾਦੇਵ ਦੇ ਵਿੱਚ ਉਹ ਗੁਣ ਨਹੀਂ ਸੀ ਦਾਤੂ ਦਾਸੂ ਵਿੱਚ ਉਹ ਗੁਣ ਨਹੀਂ ਸੀ ਜੀਤਰੀ ਚੰਦ ਵਿੱਚ ਉਹ ਬਾਕੀ ਜਿਹੜੇ ਉਹ ਗੁਣੀ ਗੁਰਮੁਖ ਦਾਸ ਦੇ ਸੀ ਉਹਨਾਂ ਵਿੱਚ ਵੀ ਇਹ ਗੁਣ ਨੇ ਕਾਹ ਗੁਣਾ ਦੇ ਸੀ ਉਹ ਗੁਣ ਜਿੱਥੇ ਸੀਗੇ ਉੱਥੇ ਜੁੜ ਗਏ ਪਰ ਸਤ ਜਿਹੜੇ ਚਾਗਾ ਸਪਰਸ਼ ਕੀਤਾ ਜਿਨ੍ਹਾਂ ਨੇ ਗੁਰਾਂ ਦਾ ਸਪਰਸ਼ ਕੀਤਾ ਉਹਾਂ ਦੀ ਗੁਧ ਗਹਾਂ ਚ ਜੀਏ ਉਹ ਬੇਦੁੱਤ ਤੱਕ ਪਹੁੰਚੇ ਜਦ ਹੀ ਨਿਰਮਲ ਜੀ ਗਦੀ ਨਿਰਮਲ ਜੀ ਇੱਕ ਉਹਨਾਂ ਦਾ ਗਿਆਨ ਗਹਾਂ ਵਧਿਆ ਗੁਧ ਗਹਾਂ ਵਧਿਆ ਨਿਰਮਲ ਜੀ धर्मदेव तो दिया स्वार्थ तो बिना व्यवहार सार जो भी है पर ता स्वार्थ सही बताओ धर्मदेव हां जी पेट त संगी राम गुण रवे पार ब्रह्म के दरगए गवे पेट संगी जेड़े निर्मल नींद हो जाती है निर्मल नींद ता है मन निर्मल नहीं होता पांच नाल है जद मन नाल होया जदे मन होया ਕਲੋਂ ਦੇ ਜਿੰਨਾ ਜਦ ਆਪਣਾ ਬੋਲਣਾ ਮਨ ਚੜਿਆ ਰਹਿੰਦਾ ਉਹਨਾਂ ਚ ਨਰਮਲੀ ਤਾਂ ਮਨ ਆਡ ਹੋਇਆ ਰਮਣੇ ਤਾਈ ਪੱਚਾ ਗੋਤੀ ਤੋਂ ਥਲੇ ਤਾਰੇ ਮਿਠੀ ਜਲਬੜਿਆ ਜਿਦ ਬੜਨਿਓ ਜਿਵੇਂ ਇੱਦਾਂ ਜੇ ਬੱਚੇ ਨੂੰ ਉਠਾਲਾਂਗੇ ਉਹਨਾਂ ਦਾ ਥਲੇ ਆਤਮਾ ਉਹ ਤਾਂ ਮਿਠੀ ਜਲਬੜੇ ਜਾ ਰੂਹ ਨੂੰ ਆਤ ਸੋ ਅਗੇ ਕਪੜੇ ਬਦਲ ਕੇ ਚੱਕਿਆ ਹੋਇਆ ਕੀ ਕੱਢ ਦੇ ਥੱਲੇ ਜੀ ਉਹਦਾ ਕੋਈ ਨਾ ਕੋਈ ਜੋ ਵੀ ਹੈ ਇਸ ਕਰਕੇ ਪੇਟ ਤਸੰਗੀ राम गुण ਰਵੇ ਚਿਤਨਾ ਜਰ ਮਨ ਨਾਲ ਜੁੜਿਆ ਹੋਇਆ ਹੈ ਨਾ ਚਿਤ ਦੇ ਹੋਇਆ ਹੈ ਕੋਨਾ ਰਾਮ ਗੁਣ ਰਵਦਾ ਨਹੀਂ ਮਾਇਆ ਨੂੰ ਬਹਿ ਜਾਂਦਾ ਹੈ ਟੁੱਟ ਕੇ ਜਦੇ ਚਾ ਕਰਨਾ ਜਾਂਦਾ ਰੂਹ ਪਾਸੇ ਬੇਟਾ ਤਸੰਗੀ RAM GURU ਰਵੇ ਜਿੰਨਾ ਜਦ ਸੰਗੀ ਦੀ ਨਾਲ ਜੋੜਿਆ ਬੁੱਧੀ ਨਾਲ ਜੋੜ ਕੇ ਰੱਖਿਆ ਉਹ ਨਾਲ ਸਫਰ ਚਲਦਾ ਅਕੇ ਤਾਂ ਦੁਲਦੇ ਰਹੇ ਜੇ ਜਾਂਦਾ ਨਹੀਂ ਕਿ ਉਹ ਕਹਾਂ ਤੇ ਜਾਣ ਨੂੰ ਛੱਡ ਕੇ ਮੈਂ ਕਿੱਥੇ ਛੱਡ ਕੇ ਕਿਵੇਂ ਜਾਣ ਬੰਤਾ ਮਾਇਆ ਚੈਨ ਛੱਡ ਕੇ ਸੱਚਾ ਨੂੰ ਜਾਣ ਕਿਵੇਂ ਸੱਚਾ ਦਾ ਸਫਰੇ ਰੁਕ ਗਿਆ ਜੇ ਤਰਬੂਜੀ ਦਾ ਬੱਚਾ ਦਾ ਭੇਡ ਝੋ ਗਿਆ ਜਾ ਕੇ ਉਸ ਪਲਾਂ ਰੱਬ ਕੇ ਲਿਆਉਂਗੇ ਨਾਲ ਚਲੂਗਾ ਕਾਹਹੀਂ ਜਾਉਂਗੇ ਤੁਸੀਂ ਇਕੱਲੇ ਕੇ ਮੈਂ ਉਹਨੂੰ ਛੱਡ ਕੇ ਜੇ ਤੁਹਾਡੇ ਖੋਲ ਹੈ ਬੱਚਾ ਚੱਕਿਆ ਹੋਇਆ ਬੱਚਾ ਨਾਲ ਜੁੜਿਆ ਹੋਇਆ ਉਹਦੇ ਫੇਰ ਦਰਗਾ ਦਵੇ ਹੈ ਫੇਰ ਦਰਗਾ ਬਰੂ ਤੇ ਫੇਰ ਸਫਰ ਮੁਕਦਾ ਹੈ ਕੇ ਨੂੰ ਕਾਮ ਬੁੱਧ ਕੇ ਸਹੀ ਉਹ ਤਾਂ ਉੱਤੇ ਘਟ ਜਾਂਦੀ ਹੈ। ਕਹਿੰਦਾ ਫਿਰ ਇਹ ਵੀ ਇਹ ਬੱਚਾ ਨਹੀਂ ਆ ਜੋ ਮੰਦਾ ਹੈ ਇਹਨੀਆਂ ਲੋੜਾਂ ਪੂਰੀਆਂ ਕਰੀਏ ਪਹਿਲਾਂ। ਫਿਰ ਚੱਲਾਂਗੇ ਗਾਹਾਂ। ਪਹਿਲਾਂ ਇਹਨੀਆਂ ਇੱਛਾਵਾਂ ਪੂਰੀਆਂ ਕਰ ਲਈਏ ਬਾਜ਼ਾਰ ਚੋਂ ਸਮਾਨ ਜਿਹੜਾ ਹੈ ਕਹਿੰਦਾ ਪਿੱਛੇ ਹੱਲਦਾ ਸਮਾਨ ਨੂੰ। ਇਹਨੀਆਂ ਲੋੜਾਂ ਪੂਰੀਆਂ ਕਰਕੇ ਲੱਗ ਕੇ ਗਾਹਾਂ ਵਾਲਾ ਸਫਰ ਖਤਮ ਕਰਦੇ। ਉਹ ਤਾਂ ਬਾਜ਼ਾਰ ਜੀ ਲੱਗਿਆ ਹੈ। ਤੁਸੀਂ ਜਦੋਂ ਬਣਾ ਲੇਗੇ ਜਾਨ। ਉਹ ਕੰਨ ਬੜਾ ਹੁਣ ਇਹਨੂੰ ਇਹਨੂੰ ਖੁਸ਼ ਚਾਲ ਲਈਏ ਫਿਰ ਚੱਲੂਗਾ ਨਾਲ ਅਪ ਇਹਨੇ ਖੁਸ਼ ਹੋਣਾ ਨਹੀਂ ਨੌਂ ਮਣ ਤੇ ਲਹੋੜਾ ਨਹੀਂ ਰਾਜ਼ਾ ਦੇਣਾ ਚਲਾ ਇਹਨੇ ਖੁਸ਼ ਹੋਣਾ ਨਹੀਂ ਬਾਜ਼ਾਰ ਬਹੁਤ ਬੜਾ ਚੀਜ਼ਾਂ ਨਵੀਆਂ ਤਾਂ ਨਹੀਂ ਰੋ ਜਾਈ ਜਾਂਦੀਆਂ ਨੇ ਇਹਦੀ ਨਿਮਾੜ ਪੂਰੀ ਹੋਣੀ ਨਹੀਂ ਸਫਲ ਚੱਲੂ ਤੇ ਹਾਂਜੀ ਭੇਟ ਤਸੰਗੀ RAM ਗੁਰੂ ਰਵੇ ਪਾਰ ਬ੍ਰਮ ਕੀ ਦਰਗਹੇ ਬੇੜ ਥਕੀ ਰਾਮਾਣ ਇਹ ਮੰਨੋ ਨਾਲ ਜਾ ਕੇ ਰਾਮ ਵਾਲੇ ਗੁਣ ਇਹਨੂੰ ਰਾਮ ਵਾਲੀ ਕਥਾ ਸੁਣਾਉਣ ਲੱਗ ਜਿਓ ਰਾਮ ਕੀ ਕਥਾ ਜਦੋਂ ਧਿਆਨ ਐਸਾ ਮੰਨਦਾ ਲਾਓ ਕਿ ਜਿਵੇਂ ਬਾਜ਼ਾਰ ਦੇਖੀ ਰਾਮ ਕਥਾ ਬਲ ਧਿਆਨ ਦੇ ਆਪਾਂ ਬਾਜ਼ਾਰ ਨਹੀਂ ਜੀ ਇਹਨੂੰ ਐਸੀ ਚੀਜ਼ ਦੇ ਲਈਏ ਦੇਖੋ ਇਹੋ ਟੀਵੀ ਦੇਖਣ ਆਦਿ ਉਹਦੇ ਝੂਠਿਆ ਸਾਰਾ ਪਰਦੇ ਤੁਹਾਨੂੰ ਕੁਝ ਵੀ ਨਹੀਂ ਦੀ ਵੀ ਲੈ ਖੰਗਾਤਾ ਅੰਦਰੇ ਜੀ ਲੱਗ ਜਾਂਦਾ ਫਿਰ ਜੈਸੋ ਚੌਕਾਂ ਦੇ ਉੱਤੇ ਕੁਝ ਵੀ ਨਹੀਂ ਉਸ ਤੋਂ ਕੁਝ ਹੈ ਹੀ ਨਹੀਂ ਬਾਜ਼ਾਰ ਹੈ ਵੀ ਬਾਜ਼ਾਰ ਹੈ ਵੀ ਗੁਰਬਾਣੀ ਨੇ ਦਰਸ਼ਨ ਖਾ ਲਈ ਕਰਾ ਤੇ ਹੈ ਕੁਝ ਵੀ ਨਹੀਂ ਉੱਥੇ ਸਾਰੇ ਦਰਸ਼ਨ ਕਰਾ ਦਿੱਤੇ ਤਿੰਨ ਲੋਕ ਦੇ ਤਿੰਨ ਲੋਕ ਦਾ ਦਰਸ਼ਨ ਕਰਾਤਾ ਬਰੇ ਬੈਠੇ ਨੂੰ ਉਹਦਾ ਹੈ ਕੁਝ ਵੀ ਨਹੀਂ ਉੱਥੇ ਲੋਕ ਨੇ ਦੇ ਦਰਸ਼ਨ ਕਦਾਈਂ ਯੂ ਦਿਖਾਈਆ ਉੱਥੇ ਉਹਨੂੰ ਫਿਲਮਾਂ ਦਿਖਾਈ ਜਾਂਦਾ ਪਾਲ ਦੀ ਫਿਲਮ ਅੰਦਰ ਦਿਖਾਤੀ ਬੈਠੇ ਨੂੰ ਬਾਹਰੋਂ ਤੋਂ ਖੋਲਦੇ ਜੀ ਬਾਹਰ ਲਈ ਦਿਖਾਉਂਦੇ ਨੇ ਫਿਲਮ ਦੇ ਸਾਰਾ ਕੁਝ ਉਹ ਪਾਲ ਦੀ ਫਿਲਮ ਅੰਦਰ ਦਿਖਾਤੀ ਸਾਰੀ ਉਹ ਪਰ ਅੰਦਰ ਫਿਲਮਾਂ ਅਸਲ ਨਹੀਂ ਹੈ ਬਾਹਰ ਬਾਹਰ ਅਸਲ ਬਾਹਰ ਹੀ ਹੈ ਉਹ ਬਾਹਰ ਵੀ ਹੋਈ ਗੱਲ ਹੈ ਅੰਦਰ ਵੀ ਹੋਈ ਚੀਜ਼ ਤਾਂ ਵੀ ਤਾਂ ਵੀ ਲੱਗ ਜਾਂਦਾ ਉਹੀ ਪਹਾੜ ਉਹੀ ਸਭ ਕੁਝ ਉਹੀ ਲੜਾਈ ਉਹੀ ਪੜਾਈ ਪਹਾੜ ਦੇ ਜਲ ਲੜਾਈ ਦੇ ਸਾਨੂੰ ਐ ਲੱਗਦਾ ਨਹੀਂ ਸੱਚੀ ਹੋ ਤੇਰੇ ਉੱਥੇ ਵਿੱਚ ਹੁਣ ਤਾਂ ਸਭ ਕੁਝ ਨਖਲੀ ਹੈ ਇਹਦੇ ਤਰੀਕੇ ਨਾਲ ਮਨ ਨੂੰ ਔਰ ਜੋੜਿਆ ਜੀ ਲਾਇਆ ਆਰਾਮ ਕਹਾਣਾ ਕੇ ਕਿ ਸਭ ਛੁੱਟ ਗਈ ਸਭ ਮਾਇਆ ਸਰਕਾਰ ਚਲਾਤੀ ਸਰਕਾਰ ਵਧਣ ਤੇ ਆ ਨਾ ਆਇਆ ਸੇ ਚੁੱਪ ਕਰਕੇ ਸੁਰੀ ਲੋਵਾ ਦੀ ਕਹਾਣੀ ਜੀ ਤਾਂ ਖਬਰ ਮੁਗਦਾ ਐਵੇਂ ਨਹੀਂ ਮੁਗਦਾ ਖਬਰ ਇਹਨੂੰ ਉਹ ਗੱਲਾਂ ਦੱਸਣਾ ਜੋ ਜਿਨ੍ਹਾਂ ਦਾ ਜਵਾਬ ਸੰਸਾਦ 'ਚ ਹੈ ਸੰਸਾਦ 'ਚ ਸਵਾਲ ਹੈਗੇ ਨੇ ਜਵਾਬ ਹੈ ਨਹੀਂ ਉਹ ਸਵਾਲਾਂ ਦੇ ਜਵਾਬ ਜੈਨੂੰ ਦੇਣ ਲੱਗੀਏ ਫੇਰੇ ਅਸਰ ਦੇ ਆਇਤਾਦਾਂ ਨਾਲ ਬਾਅਦ ਜਵਾਬੇ ਨਹੀਂ ਕਿਤੇ ਉਧਰ ਇਹਦਾ ਚਾਂਟਾ ਵਾਰਕ ਕੀਤਾ ਫਿਰ ਤੇ ਉਹ ਨੂੰ ਚਾਹਦਾ ਇਹ ਜਵਾਬ ਮਿਲਿਆ ਜਿੱਦ ਤੋਂ ਇਹ ਸਾਰਾ ਕੁਝ ਕੰਟਰੋਲ ਉਹ ਨਜ਼ਾਰਾ ਪਾਉਂਦੇ ਚੱਲਦੇ ਤੂੰ ਸਾਰਾ ਹੀ ਦਿਖਾ ਦਿੰਦਾ ਮੈਂ ਜਿਹੜੇ ਹੋਰ ਸਵਾਲ ਨੇ ਆ ਕਿਉਂ ਹੁੰਦਾ اے بولدا رہا ہے یا کیوں آیا ہے یا کیوں ہے اے کیوں دا جواب راہت تو ہاں اے کیوں ہے میرا پیے نو ਉਹ دیکھن دے لاش رو پھیر کंडा وہ تا دیکھن دی ائی دا جے تو سب کچھ ہو رہیا ہے کہنا کی بھی ٹھیکواں کہنا مٹھیکواں دی ہاں دکھانے تے بندی جے چوں بیٹھی ہے کیویں بندی ہے اے تا ہوندے ฐٹی جو کالا ہوندے ہے ฐٹی جو کالا ਅਨੂੰ ਤੁ ਜਾ ਕੇ ਦੇਖ ਲੈ ਸਾਦੀ ਹੋ ਜੀ ਨਹੀਂ ਪੈਦਾ ਹੁੰਦਾ ਉਹਨੂੰ ਕਹੇਗਾ ਧਰਤੀ ਦੇ ਪੈਦਾ ਹੁੰਦੀ ਅਜੀ ਸੀ ਉਹ ਤਾਂ ਮਿੱਟੀ ਹੋਈ ਐ ਜੀ ਜੀ ਤਾਂ ਜਾ ਕੇ ਦੇਖਣੀ ਪਈ ਹੋਈ ਐ ਐਸ ਕਹਾਵਾ ਕੁਛ ਕਹਿ ਗੁਰਬਾਣੀ ਹੁਕਰ ਲਾਇਆ ਅੰਤ ਕੀਆ ਸਭ ਮਿੱਟੀ ਹੋਈ ਐ ਮਾਟੀ ਦਾ ਪੁੱਤ ਰਹਿਤਾ ਹੁਣ ਇਹਨੂੰ ਸਰੀਰ ਨੇ ਟੀ ਮਾਟੀ ਦਾ ਪੁੱਤ ਆਡੀ ਦਾ ਪੁੱਤਰਾ ਹੈ ਵੀ ਆਡੀ ਦਾ ਪੁੱਤਰਾ ਹੈ ਵੀ ਕੈਸੇ ਨਾ ਚਿਤ ਹੈ ਸਵਾਲ ਹੈ ਜਵਾਬ ਹੈ ਜੀ ਕੈਸੇ ਨਾ ਚਿਤ ਸਵਾਲ ਹੈ ਜਵਾਬ ਹੈ ਜੀ ਕਹਿੰਦੇ ਤੈਨੂੰ ਦਿਖਾਉਣਿਆ ਕੈਸੇ ਨਾ ਚਿਤ ਇਹ ਦੇਖੇ ਤੇ ਪਤਾ ਲੱਗੂ ਕੈਸੇ ਅਛਾ ਸਰ ਸੁਣਨ ਵਾਲੀ ਗੱਲ ਨਹੀਂ ਸਮਝਾਉਣ ਵਾਲੀ ਗੱਲ ਨਹੀਂ ਦੇਖਣ ਵਾਲੀ ਗੱਲ ਹੈ ਇਹ ਆ ਦਰਸ਼ਨ ਦੇਖ ਤੇ ਪੁਨੀਤ ਕੋਣ ਨਾ ਕੋ ਦਿਖਾਣਾ ਨਾ ਚਾਉਣਾ ਕੋਣ ਨਾ ਚਾਉਣਾ ਜਿਸ ਦਾ ਜੈਸਾ ਨਹੀਂ ਜਿਸ ਦਾ ਇਹ ਸਫਲ ਦਰਸ਼ਨ ਤੇ ਕੁਝ ਨਹੀਂ ਦਾ ਸਵਾਲ ਹੈ ਜਵਾਬ ਤਾਂ ਕਦੇ ਵੀ ਨਹੀਂ ਦਿੰਦਾ ਕਿਉਂਕਿ ਉੱਥੇ ਤਾਂ ਖਾਣਾ ਜੇ ਤੁਹਾਨੂੰ ਹੈ ਕਿਤੇ ਧੋਰ ਚੱਲਦੀ ਆ ਜਿਵੇਂ ਚੱਲਦੇ ਹੋ ਕਹਿਣਾ ਹਾਂ ਇਹ ਤਾਂ ਦਿੱਖਦੀ ਆਈ ਦੀ ਤੇ ਧੋਰ ਚੱਲਦੀ ਆ ਸਾਰੇ ਨਾ ਇਸ ਤਰ੍ਹਾਂ ਨੇ ਘਟ ਪੁੱਤ ਲੀਆਂ ਸੱਜੀਆਂ ਬਹਿਤੀਆਂ ਨੇ ਸਰ ਜਲੀਏ ਉੱਥੇ ਦੇਖ ਕੇ ਦੇਖ ਉਹ ਆ ਗਈ ਨਾ ਫਿਰ ਜਾਣ ਐਉਂ ਖਾ ਜਾਣ ਨੂੰ ਮਾਂ ਦਾ ਉਹਨੂੰ ਤਾਂ ਫੇਰ ਮੰਨਦਾ ਹੀ ਨਹੀਂ ਪਹਿਲਾਂ ਇਹ ਤਾਂ ਜਾਣੂ ਨੇ ਮੰਨਦਾ ਜਾਂ ਜਾਣੂ ਮੰਨਦਾ ਉੱਥੇ ਕਰਦਾ ਨਾ ਫੇਰ ਉਹਨੂੰ ਨਹੀਂ ਮੰਨਦਾ ਫਿਰ ਉੱਥੇ ਜੀ ਲੱਗ ਜਾਂਦਾ ਇਹਦਾ ਜਿੱਥੇ ਜੀ ਲੱਗ ਜਾਂਦਾ ਇਹਦਾ ਜਿੱਥੇ ਦੇਖਦਾ ਉੱਥੇ ਵੱਡਾ ਤਮਾਸ਼ਾ ਹੈ ਬਹੁਤ ਵਾਹਕਾ ਵੱਡਾ ਤਮਾਸ਼ਾ ਛੋੜੇ ਤਮਾਸ਼ਾ ਜੇ ਵੱਡੇ ਤਮਾਸ਼ੇ ਚ ਲਾਇਆ ਜਾਵੇ ਤਮਾਸ਼ਾ ਦੇਖਣਾ ਇਹਨੂੰ ਅੱਧੀ ਹੈ ਜਿਹਨੂੰ ਤਮਾਸ਼ੇ ਦੇਖਣ ਦਾ ਸ਼ੌਕ ਹੈ ਉਹ ਛੋਟਾ ਤਮਾਸ਼ਾ ਦੇਖਦਾ ਜਾਂ ਵੱਡਾ ਤਮਾਸ਼ਾ ਦੇਖੂਗਾ ਵੱਡੇ ਜਹਾਂ ਜਹਾਂ ਆਵੇ ਛੋਟੇ ਜਹਾਂ ਕਿੰਨੇ ਉਹਦੇ ਨਾਣੇ ਬਸ ਕਿਉਂ ਇਥੇ ਵੱਡਾ ਤਮਾਸ਼ਾ ਹੈ ਤੇ ਛੋਟੇ ਤਮਾਸ਼ਾ ਵੱਡੇ ਤਮਾਸ਼ੇ ਨੂੰ ਛੱਡ ਕੇ ਕੋਈ ਛੋਟੇ ਚ ਆਉਂਦਾ ਦਿੱਲੀ ਝੜਕਾ ਕੋ ਪਾਲ ਕਿਉਂ ਆਊਗਾ ਛੋਟੇ ਛੋਟੇ ਸ਼ਹਿਰ ਮੋੜਾਂ ਦੇ ਪਿੱਛੇ ਹੈਗੇ ਨੇ ਛੋਟੇ ਸ਼ਹਿਰ ਦੇ ਬਹੁਤ ਉੱਥੇ ਕਿਉਂ ਆਊਗਾ ਕੋਈ ਉੱਥੇ ਜੀ ਲੱਗਦਾ ਹੈ ਕਰਕੇ ਵਾਹ ਵਾਹ ਦਾ ਮਦਦ ਵੱਡਾ ਤਮਾਸ਼ਾ ਦਿਖਾਉਦੇ ਨੇ ਵੱਡਾ ਤਮਾਸ਼ਾ ਦੇਖੋ ਸਮਝ ਆ ਜੀਦਾ ਹਾਂਜੀ ਸਫਲ ਦਰਸ਼ਨ ਪੇਖਤ ਪਨੇਤ ਪਰਸਦ ਚਰਨ ਗਦੀ ਨਿਰਮਲ ਰੀਤ ਪਰਸਦ ਚੱਲਣਾ ਅਤੇ ਨਿਰਮਲ ਰੀਤ ਤਾਂ ਨਿਰਮਲ ਰੀਤ ਹੁੰਦੀ ਆ ਨਿਰਮਲ ਰੀਤ ਨਾਲ ਜਿਉਣਾ ਜਿਉਂਦਾ ਜੀਵਨ ਜਿਉਂਦਾ ਜਦ ਨਿਰਮਲ ਰੀਤ ਨਾਲ ਜੀਵਨ ਜਿਉਂਦਾ ਫਿਰ ਇਹਦਾ ਸਫਲ ਸੱਚ ਖਣਦ ਵਾਲ ਨੂੰ ਕੋਦਰ ਫਿਰ ਸੱਚ ਖਣਦ ਨੂੰ ਜਾਂਦਾ ਤਾਂ ਸਫਰ ਸ਼ੁਰੂ ਹੁੰਦਾ ਤਾਂ ਗੱਡੀ ਫੜਦਾ ਸਫਰ ਗਤੀਸ਼ੀਲ ਹੁੰਦਾ ਫਿਰ ਹੈ ਹੈਂ ਤਾਂ ਛੱਪੜ ਦੇ ਪਾਣੀੋਂ ਉੱਥੀ ਜੜੇ। ਇਹ ਛੱਪੜ ਦਾ ਪਾਣੀ ਹੈ। ਫਿਰ ਦਰਿਆ ਦਾ ਰੂਪ ਧੌੜਨ ਕਰਦੇ। ਪਹਿਲਾਂ ਓੜਾ ਸੀ। ਬਰਫ਼ ਦਾ ਓੜਾ ਪਿਆ ਸੀ। ਉਹ ਲਾਂ ਦੀ ਚਲਦੀ ਸੀ। ਜਦ ਸਮਝ ਲੱਗੀ ਵੀ ਇਹ ਵੀ ਪਾਣੀ ਹੈ, ਇਹ ਵੀ ਪਾਣੀ ਹੈ। ਮੈਂ ਪੱਥਰ 'ਤੇ ਇੱਥੇ ਖੜਾ। ਇਹ ਕਾਂ ਤੁਰਿਆ ਜਾਂਦਾ ਹੈ? ਕਿੱਥੇ ਨੂੰ ਜਾਂਦਾ ਕਹਿੰਦੇ ਬੇਲਾ ਦੇ ਖੜਾ ਜਾਂਦਾ। ਰੋਥੇ ਕੀ ਹੈ? ਉੱਤੇ ਬਹੁਤ ਵੱਡੇ ਵੱਡੇ ਤਮਾਸ਼ੇ ਨੇ ਫੇਰ ਕਹਿੰਦਾ ਮੈਂ ਵੀ ਜਲਾਂ ਕਹਿੰਦਾ ਭਾਈ ਤਾਂ ਇਹ ਜਾ ਰੂਕਾਣਾ ਕਰਨਾ ਪਊ ਐ ਜਾ ਗੁਣ ਧਾਰਨ ਕਰਨਾ ਪਊ ਪੱਥਰ ਤੋਂ ਤਾਂ ਉਹ ਢਲ ਕੇ ਖੂਨ ਚ ਤਾਂ ਗਤੀਸ਼ੀਲ ਹੋਇਆ ਫੇਰ ਗਤੀ ਕਿ ਗੁਣ ਪਾਣੀ ਵਾਲਾ ਤਾਂ ਨਹੀਂ ਕੀਤਾ ਲੋ ਪਾਣੀਆ ਗੁਣ ਧਾਰਨ ਜਿੰਦਾ ਪਹਿਲਾਂ ਪੱਥਰ ਪਹਿਲਾ ਬਾੜ ਦਾ ਰੋੜਾ ਉਹ ਰੋੜਾ ਹੀ ਬਾੜ ਜਿੱਥੇ ਤੁਹਾਨੂੰ ਦੋ ਉਹ ਜਿਹੜਾ ਰੋੜਾ ਬਣਿਆ ਹੋਇਆ ਉਹ ਬਾੜ ਦੇ ਵਿੱਚੋਂ ਨਿਕਲਦਾ ਵੇਹਾਂ ੜੀਏ ਕੂਲ ਦੇ ਕੂਲ ਚੱਲ ਰਹੀ ਹੈ ਉਹ ਰੋੜਾ ਬਣਿਆ ਹੋਇਆ ਕਿੱਡੀ ਜਗ੍ਹਾ ਕਿਤੇ ਪਿਆ ਰਹੇ ਜਾ ਰੋੜਾ ਉਹ ਨਾਲ ਜੇ ਰੋੜਾ ਹਾਂਜੀ ਪੇੜ ਦਿੱਤ ਸੰਗੀ ਰਾਮ ਗੋਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਬੇ ਪੇੜ ਥੰਦੇ ਰਾਮ ਗੋਣ ਰਵੇ ਜਿੰਨਾ ਜਰ ਮਨੁ ਮਨੁ ਆਪਣੇ ਨਾਲ ਨਹੀਂ ਨਾ ਅਲਾਹ ਦਾ ਚਿੱਤ ਉਹਨਾਂ ਜਨ ਚਿੱਤ ਗੋਲਡੀ ਤੋਂ ਦੱਸ ਲਾ ਇਹ ਵੀ ਗੋਲਨੇ ਪੈਦਾ ਹੁੰਦੇ ਉਹ ਤੇ ਆਹ ਮੰਚਾਇਦਾ ਗੁਰੂ ਚਿੱਤੋ ਦਾਲਕਾ ਮਨ ਨੂੰ ਮਾਇਆ ਜਾਈ ਦੀ ਹੈ ਹੁਣ ਉਹਨੂੰ ਰਾਜੀ ਕਰਨਾ ਚਾਹੁੰਦਾ ਮਨ ਤੇੜਤ ਸੰਗੀ ਰਾਮ ਰਾਮ ਦੇ ਕੌਮਾ ਲਗਾਉਂਗਾ ਜਨਾ ਉਹ ਰਾਮ ਜੇ ਹੋਣਾ ਉਹ ਬੰਦ ਗੁਣ ਹੋਣਾ ਨੇ ਅਸਲ ਕਿ ਗੁਣ ਰਾਮ ਦੇ ਹੀ ਵਾਲੇ ਆਪਨੇ ਜਿਵੇਂ ਵਾਰੀ ਸਾਰੀ ਰਾਮ ਦੀ ਹੈ ਮਨ ਦੇ ਰਾਮ ਦਾ ਲਗਣਾ ਆਪਣਾ ਕੋਣ ਕੋਣ ਰਾਮ ਲਾਸ਼ੋਂ ਤੇ ਮਗਰ ਨਹੀਂ ਲੱਛਦਾ ਰਾਮ ਦਾ ਫਰਜ਼ ਹੈ ਸਭ ਨੂੰ ਮਗਰ ਲਾਉਣਾ ਆਪਣੇ ਜੇ ਰਾਮ ਹੈ ਤੇ ਸਦੀ ਮਗਰ ਲੱਗਦਾ ਤੇ ਰਾਮ ਆਵੇ ਡੁੱਬ ਜਾਂਦਾ ਜੇ ਰਾਮ ਸੀਧਾ ਦੀ ਮਗਰ ਲੱਗਦਾ ਰਾਮ ਡੁੱਬ ਜਾਂਦਾ ਘਰ ਜੋ ਇਹ ਗਵਾਹੀ ਠੀਕ ਫਿਰ ਉਹ ਸੀਤਾ ਦੇ ਮਗਲ ਲਿਆ ਕਿਹਾ ਸੀਰਾ ਹੁਣ ਜਾਂ ਮੇਰੇ ਕੋਲ ਆ ਕੇ ਦੇ ਮਨੂਰ ਨਹੀਂ ਕੀਤਾ ਸੀ ਸੀਤਾ ਕਹਿੰਦੀ ਐ ਸੋਨਾ ਦਾ ਮੈਂ ਲਿਆ ਕੇ ਆਵੇ ਆਹ ਨੂੰ ਪਤਾ ਨਹੀਂ ਕਿ ਕਹਿੰਦਾ ਵੀ ਸੋਨਾ ਦਾ ਮਿਲਦੇ ਨਹੀਂ ਹੁੰਦਾ ਲੇਕਨ ਸਟੈਂਡ ਨਹੀਂ ਲੈ ਸਕਿਆ ਤੇਰੀ ਇਹ ਉਹ ਖਰਾਬ ਮੈਂ ਨਹੀਂ ਜਾਣਦਾ ਤੇ ਉਹਨੇ ਪਤਾ ਕਿ ਮੁਸੀਬਤ ਹੋਣ ਵਾਲੀ ਹੈ ਦਾジア ਮਗਰ ਦਾジア ਮਗਰ ਤੁਸੀਂ ਤੁਸੀਂ ਬਸ ਪਾਲੀ ਗੱਲਾਂ ਹੋਈ ਨੇ ਗੁਰਬਾਨੀਆਂ ਵਾਲੀਆਂ ਹੀ ਉਹ ਤਾਂ ਦਸਿਆਂ ਸਿਆਂ ਕੁਛ ਕਥਾ ਨਹੀਂ ਸੀ ਹੋ ਰੁਗਿਆ ਜੀ ਸਾਰੇ ਇਹ ਰਾਮ ਨੂੰ ਬੁਜੀ ਜਦ ਗਲਤੀ ਨਹੀਂ ਦੇਖਦੇ ਵੀ ਗਲਤੀ ਕੀ ਹੋਈ ਹੈ ਗੁਣ ਗਵਾਲਿਆ ਰਾਮ ਨੇ ਪਿੱਛੇ ਲਾ ਕੇ ਦਾ ਮਗਰ ਜੋ ਰਾਗਾ ਕਹਾ ਫਤਵਾ ਲਗਿਆ ਹੋਇਆ ਗੁਰਬਾਨੀ ਤੇ ਰਾਮ ਨੂੰ ਮੈਂ ਫਤਵਾਇਆ ਹੋਰ ਵੀ ਫਤਵਾ ਉਹ ਲੋਗ ਰਮਾਇਣ ਸੁਣਦੇ ਸੀ ਰੋਜ਼ ਲੋਗ ਮਹਾਪਾਲ ਸੁਣਦੇ ਸੀ ਰੋਜ਼ ਤੇ ਕੁਸੀਦਾ ਦੇ ਉੱਤੇ ਦੀਏ ਗੱਲ ਐ ਕੋਈ ਲੱਗਦਾ ਦੁਖੀ ਦੀ ਗੱਲ ਐ ਦੁਆ ਦੇ ਰਮਾਨ ਉਹ ਮਹਾਪਾਲ ਦੇ ਵੇਸਣੇ ਨਾਲ ਤਾਂ ਕਿਤੇ ਹੋਰ ਗੱਲ ਹੋਈ ਐ ਪਿੰਡਾਂ ਜਨਰਲ ਆਜ਼ਮ ਨੂੰ ਕਹੀਆ ਸਾਰੀ ਗੱਲੇ ਹੀ ਰਾਤ ਤੇ ਖੜੀਆ ਉਸ ਰਾਮ ਨੂੰ ਕਹ ਰੋਗਾ ਰਾਮ ਨਕਾਲਾ ਭਿਆ ਸੀਤਾ ਲਾਸ਼ ਨੂੰ ਵਿਛੜ ਗਿਆ ਸੀਤਾ ਲਾਸ਼ ਨੂੰ ਦੋ ਪਿਛੋੜ ਬੈਠਿਆ ਅਗਰ ਲੜਾ ਹੋਇਆ ਇੱਥੇ ਆਉਣਾ ਹੀ ਰਾਮ ਦੀ ਗਲਤੀ ਸੀ ਸਤਾਰਚ ਆਉਣਾ ਹੀ ਰਾਮ ਦੀ ਗਲਤੀ ਹੈ ਜਦੋਂ ਲੈਣਾ ਹੀ ਰਾਮ ਦੀ ਗਲਤੀ ਹੈ ਰਾਮ ਕੀ ਤੇ ਜਨਮ ਸੀ ਰਾਮ ਕੀ ਤੇ ਭਵਜਾ ਤੇ ਡੁੱਬ ਜਿੜਣਾ ਕੰਮ कोई गलती थी ता डिगे गेट जदौ राम गुण रदा गुण ग्वाले हर विसरत गुण ग्वाले राम ने ता गर्व च है राम गर्व च ये कौन फेता न कर होगा ता राम गर्व छटू गुण ता फेर भी धारण कराएगा ने गुण ता रावण कोड़े ने चार वेद ता ज्यादा ता रावण है राम उ चार वेद ता ज्यादा फिर भी नहीं होन रहे ऋषि अमोनिया ਦਾ ਉਹ ਨੁਮਾਇਸਾ ਜਾਲ ਜਿਪਾਇਆ ਚਾਰ ਵੇਦ ਦਾ ਗਿਆਤੇ ਨੂੰ ਇਹ ਤੋਂ ਬਰਵਾਤਾ ਚਾਰ ਵੇਦ ਦੇ ਗਿਆਤੇ ਪੰਡਤ ਨੂੰ ਬ੍ਰਾਹਮਣ ਨੂੰ ਇਹ ਤੋਂ ਮਰਵਾਤਾ ਚਾਰ ਵੇਦ ਦੇ ਬਰਦਾਸ਼ਤ ਜਿਹੜਾ ਮਸਲਾ ਰਿਸੀਆਂ ਹੁੰਦੀਆਂ ਨੂੰ ਅੱਜ ਦੇ ਸਮਾਜ ਨੂੰ ਜੋ ਇੱਕੋ ਸਮਾਜਾਂ ਨੂੰ ਵੇਦ ਨਹੀਂ ਬਰਦਾਸ਼ਤ ਚਾਰ ਵੇਦ ਦਾ ਗਿਆਤਾ ਰਾਵਣ ਬਰਵਾਤਾ ਹੈ ਤੇ ਰਾਵਣ ਤੇ ਚਾਰ ਵੇਦ ਦਾ ਗਿਆਤਾ ਰਾਮ ਸੀਸਰ ਜੋ ਉਹਰੇ ਜੀ ਨੂੰ ਮਾਰਨ ਵਾਲਾ ਦਾ ਭਗਵਾਨ ਹੈ। ਯਾ ਜੀ ਗੱਲ। ਕੀ ਜਾਣਾ ਚਾਹੁੰਦੇ ਨੇ? ਕੀ ਮੈਸੇਜ ਦੇਣਾ ਚਾਹੁੰਦੇ ਨੇ? ਪਾਪ ਸਾਧ ਕਰਕੇ ਫਸਾ ਕੇ ਰੱਖਣਾ ਚਾਹੁੰਦੇ ਨੇ ਹੁਣ ਕਿੱਥੇ? ਪਾਪ ਦਾ ਤੋਂ ਬਾਅਦ ਨਹੀਂ ਦੇਣਾ। ਜਾਨ ਦੇਣਾ, ਜਾਨ ਉਹ ਜਿਵੇਂ ਦੀ ਪੂਜਾ ਹੁੰਦੀ ਆ ਜਿਹੜਾ ਗੰਗਾ ਲਿਆ ਬਾਗੀਰਥ। ਉਹ ਆ ਜਟਾ ਵਿੱਚ ਵੀ ਗਾਹਾਂ ਜਾਣ ਦਿੰਦਾ। ਪਬਲਿਕ ਲਈ ਗੋਦਾ ਜੀ ਕੋਦਾ ਜੀ ਕੋਦਾ ਜੀ ਗੰਗਾ ਜੀ ਜਾਂਦੀ ਪਬਲਿਕ ਲਈ ਫੈਲ ਗਈ ਪਬਲਿਕ ਲਈ ਮੁਕਤੀ ਹੋ ਜੂਗੀ ਨਾਲ ਮੁਕਤੀ ਕਰਵਾ ਰਿਹਾ ਸਾਰੇ ਕਿ ਨਾ ਨਾਜ਼ ਦੀ ਪੇਸ਼ੀ ਪਾ ਰਹੇ ਮੁਕਤੀ ਸ਼ੋਅ ਕਰਵਾ ਰਹੇ ਸਾਰਾ ਇਹ ਘਾਸਾ ਪੜ ਕੇ ठीक है, है।, है। वो जड़ा सांगाबा आदमी सी व्यक्ति सी ठीक और वानने सी रामचंद्र बैठे नहीं सी वो भगवान का थे कृष्ण व्यक्ति ही हो भगवान का थे शिव व्यक्ति ही हो भगवान का थे इथे फजने कुड्डी आके हु तू सी व्यक्ति नु भगवान बनाया ते असली भगवान बन गए कुर्बानी वो हरलदी है दस पाशा ਕਾਲ ਹੀ ਪਾਇ ਤੇ ਹੋ ਭਗਵਾਨ ਕਾਲ ਹੀ ਪਾਇ ਤੇ ਉਹ ਭਗਵਾਨ ਸੁ ਜਾਗਤੇ ਆ ਜਦ ਜਾਤੀ ਕਲਾ ਹੈ ਜਿਦੀ ਕਲਾ ਸਾਰਾ ਜਗ ਸਰੀਰ ਤੁਸ ਦੇ ਫਿਰਦੇ ਨੇ ਉਹ ਭਗਵਾਨ ਕਾਲ ਵਸ ਕਾਲ ਵਸ ਹੈ ਕਾਲ ਵਸ ਦੇਦਾਰੀ ਹੈ ਭਗਵਾਨ ਹੁੰਦੇ ਦੇਦਾਰੀ ਹੈ ਭਗਵਾਨ ਹੁੰਦੇ ਕਾਲ ਵਸ परमेश्वर और भगवान का नहीं पता है, परमेश्वर गायब कर दो भगवान रख ले काली पाए पे हो भगवान सु जागते है जग जग कला है काली पाए सुरा सुरसंतर्व चच पुचब् हिसाब हिसाब है ना काली पाए पे हो ब्रह्मा शिव काल पाए पे ब्रह्मा शिव ब्रह्मा शिव के काली पाए पे ओ जुगिया है जुगिया कौन है शिव जी? मुसलमान हैं ओथो चक्के काल है उत्थो काली पाए पे ओ भगवान ल्या काली पाए पे ओ भगवान सु जागत है जग जागी कला है काली पाए पे ओ ब्रह्मा शिव काली पाए पे ओ जुगिया है काली पाए सुरा सुर ਜੋ ਸਾਬ ਦੇ ਦਿਸਾ ਹੈ ਔਰ ਜੋ ਕਾਲ ਸਦਾ ਹੈ ਬਸ ਕਾਲ ਕੇ ਇਹ ਕੀ ਕਾਲ ਅਕਾਲ ਸਦਾ ਅਕਾਲ ਇੱਕ ਸਦਾ ਸਦਾ ਕਾਲ ਹੈ ਉਹ ਅਕਾਲ ਕੌਣ ਹੈ ਕਾਲ ਅਕਾਲ ਪੁਰਖ ਕੀ ਉਹ ਅਕਾਲ ਪੁਰਖ ਨੇ ਕਾਲ ਬਣਾਇਆ ਕਾਲ ਉਹਦਾ ਹੁਕਮ ਇਹ ਵਿਆਖਿਆ ਕਰਦੇ ਇਸ ਗੱਲ ਦੀ ਜਿਹੜੇ ਗ੍ਰੰਥਾਂ ਦੀ ਇਹ ਵਿਆਖਿਆ ਕਰਦੇ ਨੇ ਸਾਰੇ ਫਾਸ਼ ਜਾਣਗੇ। ਬੁੱਢਾ ਆਦਮੀ ਆਣਾ। ਜਿਹੜੇ ਗ੍ਰੰਥਾਂ ਦੀ ਵਿਆਖਿਆ ਕਰਕੇ ਆਪੇ ਫਾਸ਼ ਜਾਣਗੇ। ਜਿਹੜਾ ਇਹਨਾਂ ਦਾ ਭਗਵਾਨ ਉਹ ਦੱਸਣ ਕਿ ਉਹ ਜਿਹੜਾ ਮਰਿਆ ਸੀ ਉਹ ਦੱਸ। ਜੇ ਉਹ ਮਰਿਆ ਜੰਮਿਆ ਵਿਅਕਤੀ ਸੀ ਇਹਨਾਂ ਦਾ ਕਿਹੜਾ ਹੈ ਵਿਅਕਤੀ ਹੈ ਨਹੀਂ ਕਿ ਉਹ ਦੱਸ। ਤਦੋਂ ਫਾਸ਼ ਜਾਣੇ ਕਿ ਜੋ ਘਰੋ RAM ਅਜੋ ਨਾ ਜਾਇ ਹੈ ਜੋ ਤੁਸੀਂ ਘਰੋ RAM ਅਜੋ ਨਾ ਹੈ ਸਭ ਕੋ ਕੌਸ਼ਲ ਕੁਖ ਜਿਓ ਜੁ ਕਿਸ ਲਿਆ ਦਾ ਮੁਰਾਤੀ ਹੋ ਤੁਸੀਂ ਕਿ ਮੈਂ ਕਹਿੰਦਾ ਹਾਂ RAM ਚੰਦਰ ਜਮਿਆਰੀ ਹੈ ਇਹ ਫਸੇ ਪਏ ਨੇ ਆਪੇ ਸਬੂਤ ਗ੍ਰੰਥ ਗੋਲ ਦੇ ਨਾ ਕਰੋ ਕਰੋੜਾਂ ਦੀ ਦਾਜਾਤ ਦੇ ਵਿੱਚ ਕੋਈ ਕਿਸੇ ਨੂੰ ਜਿਹਨੂੰ ਮਰਜ਼ੀ ਭਗਵਾਨ ਬਣਾ ਦੇ ਤੁਹਾਡਾ ਠੇਕਾ ਨਹੀਂ ਤੁਹਾਡੇ ਵਾਲੇ ਕੋ ਲੋਕ ਮੰਨ ਕਿਉਂਕਿ ਤੁਸੀਂ ਪਰਪਰਾਤ ਹੋਰੀ ਹੈ। ਇਸ ਕਰਕੇ ਗੁਰੂ ਨਾਨਕ ਨੇ ਗੁਰਬਾਣੀ ਨੇ ਪਕਤਾ ਨੇ ਵਿਅਕਤੀ ਗੁਰੂ ਨਹੀਂ ਗੁਰੂ ਅਰਿਜ ਤੁਸੀਂ ਜੇ ਗੁਰੂ ਬਣਦੇ ਹੋ ਤਾਂ ਗੁਰੂ ਕੋਈ ਵੀ ਬਣ ਸਕਦਾ। ਲੋਕਾਂ ਦੀ ਮਰਜ਼ੀ ਆਦਾ ਫਿਰ ਤੇ ਤੁਹਾਡੀ ਮਰਜ਼ੀ ਆ ਲੋਕਾਂ ਦੀ ਮਰਜ਼ੀ ਹੈ। ਤੁਸੀਂ ਥੋਪ ਨਹੀਂ ਸਕਦੇ ਕਿਸੇ ਤੇ ਵੀ ਇਹ ਭਗਵਾਨ ਹੈ। ਪਰ ਆਪਣੀ ਮਰਜ਼ੀ ਹੈ ਕਿਤੇ ਆਪਣੀ ਮਰਜ਼ੀ ਆ ਗਈ ਉੱਥੇ ਮジョਰਿਟੀ ਹੈ ਜਿਹਨੂੰ ਮਰਜ਼ੀ ਭਗਵਾਨ ਬਣਾ ਦੇ ਤੁਸੀਂ ਕਹੋ ਹੁਣ ਰੋਕਣਾ ਹਾਂਜੀ ਪੇੜ ਤ ਸੰਗੀ RAM ਰਵੇ ਬ੍ਰਹਮ ਕੀ ਦਰਗਾਹ ਗਵੇ ਪੇੜ ਸੰਗੀ ਜਦੋਂ ਮਨ ਨੂੰ ਜਿੱਤ ਲਈਦਾ ਮਨ ਨੂੰ ਕਾਬੂ ਕਰ ਲਈਦਾ ਮਨ ਨੂੰ ਮਨਾ ਲਈਦਾ ਚਲੋ ਸਮਝਾ ਲਈਦਾ ਮਨ ਨੂੰ और अपने ਨਾਲ ਜੋੜ ਲਈ ਜੇ ਆਪਣੇ ਮਨ ਨੂੰ ਤਾਂ RAM ਹੈ ਜਿਹੜਾ ਕੋਣ ਬੱਤਾ ਤਾਂ ਨਹੀਂ RAM ਉਹ ਗੁਣ ਹਰਾਈ ਜੇ RAM ਦੀ ਗੁਣ ਨਹੀਂ ਆ RAM ਦੇ ਗੁਣ ਕਿ RAM ਦਾ ਜੇ ਮਨ மே ਕਾਬੂ ਹੈ ਤਾਂ ਗੁਣ ਉਹ ਜਿੱਥੋਂ ਨਹੀਂ ਜਿਹਦਾ ਮਨ மே ਕਾਬੂ ਉਹ ਗੁਣ ਨਹੀਂ पैटे तो राम गुण रवे की दर गए गवे ता पार ब्रह्म की है।, पार है ये कौन है राम कौन है राम और पार ब्रह्म दोनों हो गए बैठे आ जाना आ पार ब्रह्म ने हो साईं पापा भल्ले राम दे बराबर है ਰਾਮ ਭਗਤਾਂ ਦੇ ਖਿਲਾਫ ਤੇ ਕ੍ਰਿਸ਼ਨ ਭਗਤਾਂ ਉਹ ਵੀ ਤਾਂ ਲੋਆ ਭੈਣਾ ਥੋੜੇ ਹਿੰਦੂ ਨੇ ਜੇ ਸੰਭਾਅ ਰਾਮ ਭਗਤਾਂ ਦੇ ਹੀ ਭਗਤ ਰਾਮ ਭਗਤ ਦੇ ਖਿਲਾਫ ਨੇ ਜਿਹੜੇ ਰਮਾਂਸੀ ਜਦ ਕਾਸ਼ੀ ਲੈ ਗਿਆ ਪੜ ਕੇ ਦੇਖੋ ਗ੍ਰਾਮ ਦੋਨੋਂ ਵਿਆਹ ਆਸ਼ੀਰਵਾਣੇ ਕੋਲ ਸਰਦਾਰ ਤੁਸੀਂ ਰਾਮ ਤੁਸੀਂ ਰਾਮ ਤੁਸੀਂ ਰਾਮ ਕਿਹ ਤੋਂ ਪੈਸ਼ ਸ਼ਬਦੀ ਪੁੱਤ ਤੂੰ ਕੋਲ ਹੁਣ ਜਾਇਓ ਕਿਹ ਲੈ ਜਾਵੀਂ ਅਸੇ ਨਹੀਂ ਪੜਨ ਨੂੰ ਤੇ ਕੀ ਆ ਕੇ ਦੇਖਣ ਉਹ ਸਾਰੇ ਬੇਦਖਲੇ ਆਪਣਾ ਗ੍ਰੰਥੇ ਪੜ ਲੈਣੋ ਚੀਜ ਉਹ ਸਰਤਾਲੇ ਨੂੰ ਪੁੱਛਣਾ ਨਹੀਂ ਜਾ ਕੇ ਜਿਹੜਾ ਨੂੰ ਵਟ ਵਟ ਪੈਂਦਾ 540 ਸਾਲ ਦਾ ਹਾਂਜੀ ਬਾਹਰ ਬ੍ਰਹਮ ਚੀ ਦਰਗਹ ਰਵੇ ਗੱਬਾ मन संतोष आत्म पुष्टि आने सुन कर वचन गवे दर्दी दर्दी, दर्दी। जाना गवन करना हां गमन करना पारब्रह्म दी दरगाह प्रवेश करदा जाके कौन करदा प्रवेश राम करदा प्रवेश जब राम गुण धारण करदा ता पारब्रह्म दी दरगाह जानदा नहीं है भवसागर डूबे होए राम इठे जे राम गल करदे ਆਇਂਦਾ ਕਰ ਉਹ ਜੋ ਘਰ ਆਉਂਦਾ ਜੋ ਨਾ ਜਾਇਆ ਤਾਹਿਲ ਕੋ ਕੌਸ਼ਲ ਕੋ ਖਿਜੇ ਹੋ ਜੀ ਕੁਛਲੇ ਦੀ ਕੁਖਿਓ ਪੈਦਾ ਨਹੀਂ ਹੋਇਆ ਤੁਸੀਂ ਕਿ ਮੈਂ ਕਹਾਂ ਲੋ ਨਹੀਂ ਹੋਇਆ ਫਿਰ ਤੁਹਾਡੀ ਰਵਾਨੀ ਝੂਠੀ ਹੈ ਸਾਹਿਬ ਜੇ ਰਮਾਨ ਤੋਂ ਨਹੀਂ ਮੰਨਦੇ ਰਾਮ ਦਾ ਸਬੂਤ ਕੋਈ ਨਹੀਂ ਰਮਾਨ ਤੋਂ ਬਿਨਾ ਰਾਮ ਦਾ ਸਬੂਤ ਹੋਕ ਤੂੰ ਕਿਹੜੇ ਰਾਮ ਦੀ ਗੱਲ ਕਰਦਾ ਰਮਾਨ ਵਾਲਾ ਰਾਮ ਗਿਆ ਤੁਹਾਡਾ ਹੋਰ ਰਾਮ ਆ ਰਾਮ ਦੇ ਜੇ ਹੋਰ ਕਿਤੇ ਲਾਣਗੇ ਸਾਡੇ ਆਲੇ ਫਿਰ ਉਹ ਬੇਟਾਂ ਚ ਲਾਣਗੇ ਸਾਡੇ ਆਲੇ ਇਹ ਕਿਤੇ ਸਾਡੇ ਹਾਂ ਸਾਡੋ ਰਜਾ ਆਰਾਮ ਦਾ ਰਜਾ ਆਇ ਵਿਛੇ ਜਗਰਾਮ ਹੋ ਔਰ ਰਜਾ ਆਰਾਮ ਨੇ ਮਾਇਆ ਵਿਚਿਆ ਰੱਖਣਾ ਜੇ ਰੱਖਿਆ ਹੋਇਆ ਹੋ ਹਰਾਮ ਹਾਂ ਸੁਣ ਕਰ ਵਚਨ ਕੰਨ ਅਗਾਨੈ ਮਨ ਸੰਤੋਖ ਆਤਮ ਸਤਿਆਨੈ ਸੁਣ ਕਰ ਵਚਨ ਵਚਨ ਜੇ ਸੁਣੈ ਮੰਨ ਦੇ ਬੰਦੀ ਗੱਲ ਕੰਨ ਆਗਾਨੈ ਤਾਂ ਉਹ ਉਹਦੀ ਜਿਹੜੇ ਸ਼ੱਕਾਵਾਂ ਦੂਰ ਹੋਈਆਂ ਤਾਂ ਰ ਗਿਆ ਨੰਦ ਹੋ ਗਿਆ ਸੁਣ ਕੰਨਾਂ ਦੇ ਵਿੱਚ ਕੁਝ ਧੁਖ ਸੀ ਸੁਣਦੀ ਐਸੇ ਸਵਾਲ ਸੀ ਜਿਨ੍ਹਾਂ ਦਾ ਜਵਾਬ ਹੈ ਕੰਨ ਆਗਾਨਾ ਕੇ ਸੁਣ ਕੇ ਕੰਨ ਲੱਜਣਾਂ ਦੇ ਕੇ ਅੱਖਾਂ ਲੱਜਣੀਆਂ ਅੱਖੀ ਦੇਖਣਾ ਲੱਜੀਆਂ ਕੰਨੇ ਸੁਣਨਾ ਰਜਿਆ ਕੂੜੇ ਪਰਵਾਸੇ ਔਰ ਅੱਜ ਕੇ ਮੈਂ ਜਾਂਦਾ ਕੂੜ ਦਾ ਪਰਵਾਸੇ ਦਿੱਤੇ ਰਹਿ ਕੂੜ ਦੇ ਸਾਰੇ ਸਾਰੇ ਗ੍ਰੰਥ ਦਾ ਝੂਠ ਦੇ ਲਿਖ ਲੈ ਤੁਸੀਂ ਕੂੜ ਤੇ ਭਰੋਸਾ ਕਹਿੰਦੇ ਕਰ ਲੋ ਕੰਨ ਰੱਜ ਕੇ ਜਾਂਦੇ ਸਾਰੇ ਸਮਝਾਤਾਂ ਦਾ ਕੂੜ ਦੇ ਤਾਂ ਸਾਰੇ ਗੁਰਦਵਾਰੇ ਦਾ ਕੂੜ ਦਾ ਪ੍ਰਚਾਰ ਰੱਜ ਕੇ ਜਾਂਦਾ ਕੋਈ ਕੂੜ ਦੇ ਪਰਵਾਸੇ ਦੀ ਰੱਜੇ ਕਦੇ ਕਰਨ ਕਿਸੇ ਦੇ ਗੁਰੂ ਦੇ ਗੁਰਬਾਣੀ ਦੇ ਗਿਆਨ ਨਾਲ ਰਜੇ ਇਹ ਤੁਸੀਂ ਲਖੋ ਲਿਆ ਕੂੜਾ ਪਰਵਾਸਾ ਦੇਣ ਲੱਗੇ ਲੋ ਗੁਰਦਵਾਰੇ ਦੀ ਛੱਡ ਗਏ ਕਾਰਨਾ ਆਗਾ ਨੈਂ ਕਾਰਨਾ ਆਗਾ ਨੈਂ ਲਫ਼ਜ਼ ਕੰਨ ਰਜੇ ਨੇ ਕੰਨੀ ਸੁਣਨਾ ਰਜਿਆ ਕੂੜੇ ਨੂੰ ਕਦੋਂ ਆਦਾਂ ਨੇ ਹੋਵੇ ਅਰ ਆਨੇ ਤਾਂ ਹੋਏ ਜੇ ਗੁਰਬਾਣੀ ਸੁਣੀ ਜੱਗੂ ਸੁਣੇ ਜੱਗੂ ਨਾ ਬੈ ਕੋਣ ਤਾਂ ਅੜਜੀ ਤੇ ਸੇ ਕਰਨ ਹਾਂ ਸੋਰ ਘਰ ਵਜਨ ਕਰਨ ਅਗਾਨੇ ਮਨ ਨੂੰ ਦੋਸਤ ਆਪਰ ਬਾਣ ਤੇ ਕਲ ਰਾਜੇ ਦਾ ਜੋ ਸਵਾਲ ਸੀ ਸਵਾਲ ਸੀ ਜਵਾਬ ਹੈ ਨਹੀਂ ਸੀ ਤਾਂ ਉਹ ਫਿਰ ਉਹ ਭੁੱਖ ਸੀ ਸੁਣਨ ਦੀ ਦੇਖਣ ਦੀ ਭੁੱਖ ਤਾਂ ਅੱਖਾਂ ਨੂੰ ਭੁੱਖ ਹੈ ਜੇ ਖਾਣ ਦੀ ਭੁੱਖ ਹੈ ਤਾਂ ਰਸਾਂ ਨੂੰ ਜੀਵ ਨੂੰ ਭੁੱਖ ਹੈ ਛੜਦੀ ਭੁੱਖ ਹੈ ਮਨ ਸੰਤੋਖ ਆਤਮਪਤੀ ਆਨੇ ਮਨ ਸੰਤੋਖ ਤਾਂ ਆ ਮਨ ਸੰਤੋਖ ਹੋਰ ਗਿਆਨ ਅੰਦਰ ਇਹਦੇ ਕੋਲ ਸੀ ਨਾ ਹੁਣ ਕਹਿੰਦਾ ਹੁਣ ਠੀਕ ਉਹਨੇ ਕਹ ਦਿਖਾਉਣੇ ਚੱਲ ਕੇ ਦੇਖੀਏ ਉੱਥੇ ਉਹ ਵੱਡਾ ਤਮਾਸ਼ਾ ਹੈ ਇਹ ਛੋਟਾ ਤਮਾਸ਼ਾ ਛੋੜੇ ਤਮਾਸ਼ੇ ਤਾਂ ਉੱਥੇ ਆਨੇ ਬਸ ਹੈ ਤਾਂ ਸਿਰਫ ਪੜ੍ਹਾਵਾ ਮੇ ਜੋਨੇ ਫਲ ਮਿਲਦਾ ਹੁੰਦਾ ਫਲ ਅਸਲੀ ਪੇੜ ਤੋਂ ਮਿਲਦਾ ਹੁੰਦਾ ਇਹ ਤਾਂ ਉਹ ਪੜਛਾਵਾ ਹੈ ਉਹਦੇ ਤੋਂ ਆ ਤਾਂ ਸੁਪਨੇ ਦਾ ਸੰਸਾਰ ਹੈ ਅਸਲੀ ਸੰਸਾਰ ਕਿਤੇ ਹੋਰ ਤੇ ਤੁਹਾਨੂੰ ਅਸਲੀ ਦਿਖਾਉਣੇ ਆ ਸਰਕਾਰ ਵੀ ਹਾਂ ਹੁਣ ਠੀਕ ਆ ਉੱਡ ਚੱਲਦੇ ਹਾਂ ਹਾਂ ਮਨੁਸੰਤੋਗ ਆਤਮਪਤੀਆਂ ਨੇ ਜਦ ਮਨੁਸਤੋ ਹੋਇਆ ਤਾਂ ਆਤਮਾ ਤਸੱਲੀ ਹੋਈ ਪਰ ਰਾਮ ਨੂੰ ਤਸੱਲੀ ਹੋਈ ਆ ਹਾਂ ਆਜੋ ਰਾਮ ਲਿਓ ਪਰਮਾਤਮਾ ਰਾਮਾ ਆਤਮਾ ਰਾਮ ਉਹ ਰਾਮ ਕੀ ਹੈ ਰਾਮ ਨੂੰ ਆਖਣ ਮੱਢ ਗਈ ਜੰਦੂ ਕਬੀਰ ਸੰਤ ਕਬੀਰ ਨੂੰ ਸੰਤ ਬਣ ਕੇ ਦਾ ਫਸ ਗਿਆ ਹੈ ਕਬੀਰ ਨੂੰ ਸੰਤ ਬਣ ਲਿਆ ਗੁਰਨਾਥ ਸਿੰਘ ਦੀ ਨੂੰ ਦੁਨੀਆਂ ਨੇ ਮੰਨ ਲਿਆ ਫਸ ਕੇ ਹੁਣ ਭਜਨ ਕਿੱਦ ਨੂੰ ਭਜਦਾ ਹੈ ਕੋਟਾ ਕੋਟਾ ਹੈ ਗਿਆਨ ਹੈ بڑے بڑے ਜੱਜ ਨੇ بڑے بڑے ਸਕਾਲਰ ਨੇ ਸਭ ਸਮਝੇ ਨਾ ਜਿਆਦਾ ਹਾਂ ਜਾ ਕੇ ਸੌਬ ਜਿਹੜਾ ਉਹਨਾਂ ਨੇ ਗੱਲ ਇੱਕ ਸਕਿੰਟ ਲੱਗਣੀ ਹੈ ਐ ਨਹੀਂ ਬੰਦੇ ਸਾਰੇ ਸਿਆਣੇ ਨੇ ਇਹਨਾਂ ਸਾਤਾਂ ਨੂੰ ਸਿਆਣੇ ਨੇ ਬੰਦੇ ਸਾਰੇ ਲੇਕਿਨ ਉਹਨਾਂ ਦਾ ਵੀ ਸਾਡੀ ਗੱਲ ਹੈ ਪੜਾਈ ਨੇ ਹੋਰ ਕਿੱਥੇ ਪੜਾਈ ਜਾਂ ਦੂਰੇ ਨੇ ਦੱਸਣਾ ਇਹਨਾਂ ਚ ਸਭ ਜੱਟ ਸਾਹਿਬ ਨੇ ਜੀ ਉਹਨਾਂ ਕਹਿੰਦਾ ਮਹਾਦਾ ਜੀ ਆਪ ਗਲਤੀ ਕਰ ਰਹੇ ਹੋ ਫਿਰ ਤਸਲੀਅਤ ਤੇ ਹੈ ਐਸਾ ਕਿਉਂ ਕਹ ਰਹੇ ਹੋ ਆਪ ਕੋਈ ਜਵਾਬ ਹੀ ਨਹੀਂ ਉਹ ਲੁਕ ਜਾਣਗੇ ਜਾ ਕੇ ਅੰਦਰ ਹਾਂ ਜੀ ਪੂਰਾ ਗੁਰ ਅਖਿਓ ਜਾਗਾ ਮੰਤਰ ਅਮਰਤ ਦ੍ਰਿਸ਼ਟੀ ਦੇਖਿਓ ਹੋਇ ਸੰਤ ਪੂਰਾ ਗੁਰ ਅਖਿਓ ਜਾਗਾ ਮੰਤਰ ਜਾਗਾ ਮੰਤਰ ਉਹ ਪੂਰਾ ਗਿਆ ਨਾ ਅਜਿਹਾ ਮੰਤਰ ਦੱਸਿਆ ਗਿਆ ਅਖਿਓ ਆਖਿਆ ਗਿਆ ਹੈ ਅਖਿਓ ਦਾ ਇੱਕ ਹੋਰ ਵੀ ਅਸਲ ਤੇ ਬੋਲ ਗੱਲ ਤੇ ਪਰੇ ਗਿਆ ਉਹਦਾ ਮੰਤਰ ਉਹ ਨਹੀਂ ਦੱਸ ਸਕਦਾ ਉਹ ਖਰਦੇ ਦਾ ਪਰੇ ਆ ਉਹਦਾ ਮੰਤਰ ਸਿੱਧਾ ਜਿਹੜਾ ਆ ਉਹ ਤਾਂ ਨਹੀਂ ਬੋਲ ਕੇ ਦੱਸਿਆ ਜਾ ਸਕਦਾ ਉਹਦੇ ਬਾਰੇ ਕੁਝ ਦੱਸਿਆ ਉਹਦਾ ਮੰਤਰ ਦਾ ਨਾਮ ਹੈ ਉਹਦਾ ਘਰ ਤੇ ਪਰੇ ਬੋਲਣ ਜਾਸਰ ਆਖਣਾ ਓਖਾ ਉਹਦਾ ਓਖਾ ਬੋਲਣਾ ਉਹ ਤਾਂ ਉਹੀ ਬੋਲ ਸਕਦਾ ਆ ਮੰਤਰ ਜਿਹੜਾ ਦੱਸਿਆ ਇਹ ਗੁਰ ਮੰਤਰ ਹੈ ਇਹ ਸਾਡੇ ਕੋਲ ਨੇ ਬਿਆਨ ਕੀਤਾ ਜਿਹਨੋਂ ਬਿਨਾਂ ਸੱਲਾਂ ਤੇ ਸੁਣਿਆ ਉਹਨੇ ਬਿਆਨ ਕੀਤਾ ਇਸ ਕਾਹਕੇ ਜਪਣ ਦੀ ਲੋੜ ਹੈ ਗੱਤੀ ਕਰ ਜਾਣੀ ਆਪਾਂ ਸਮਝਣ ਦੇ ਆਖਿਓ ਜਾ ਕਾ ਮੰਤਰ ਉਹਦਾ ਮੰਤਰ ਹੈ ਬੋਲਣ ਦੇ ਪਰੇ ਹੈ ਅਮਰਤੁ ਦ੍ਰਿਸ਼ਟੀ ਦੇਖੇ ਹੋਏ ਵਰਤ ਉਸ ਉਹ ਕੀ ਹੈ ਅਮਰਤ ਦ੍ਰਿਸ਼ਟੀ ਹੈ ਉਹਦੀ ਸਾਡੀ ਦ੍ਰਿਸ਼ਟੀ ਦੇ ਤੇ અમર દેશી ઓ દિઓ અમર अमर દેન વાળી દિસ્ટી અમર પ્રસારે હે સબ દે ઉપર હો ઓ અંદર જેડી આલતરા કોંડી આવાજ એહી તા અમર પ્રસારે હે હોર થી વસારે હે ઓ બહાર થોડી બરસના હે બહાર તો આખ બરસદી હે બહાર માં જેડા મી બેસના ના એ ભી આખ હોતી હે એ પાણી આતા અંદર ઓ આત્મા દે પહેણે અંદર ઓ બહુ બહાર ઓ તો શરીર તે પહેણે પાલ લે જેડા શરીર આ ਅੱਦਲਾ ਇਹਦਾ ਸਰੀਰ ਆਤਮਾ ਉਹਦੇ ਚ ਮੁਕਤ ਵਰਸਦਾ ਚਿਮਚਿਮ ਵਰਸਾ ਅਮਰ ਧਾਰਾ ਉਹਦਾ ਅਖੰ ਮੰਤਰ ਗਾ ਅੰਤਰਾ ਸੁਣਿਵਾਜੋ ਜੇ ਉਹਦਾ ਕੋਈ ਦਰਸ਼ਨ ਕਰ ਲਵੇ ਉਹਨੂੰ ਸਮਝੇ ਕੋਈ ਉਹਦੇ ਨਾਲ ਜੁੜ ਕੇ ਰਹੇ ਦੇਖੇ ਹੋਏ ਸੰਤ ਅਰ ਉਹਦੀ ਦਰਸ਼ਨ ਲਵੇ ਕਾਰੋਮ ਲਵੇ ਸਮਝ ਉਹਨੂੰ ਦੇਖਦਾ ਸੰਤ ਬਣ ਜਾ ਸੰਤ ਹੋ ਜਾ ਆਹ ਸ਼ਾਂਤ ਹੋ ਜਾਂਦਾ ਮਾਇਆ ਦੀ ਬੁੱਖ ਮਿਟ ਜਾਂਦੀ ਹੈ ਮਾਇਆ ਦੀ ਬੁੱਖ ਮਿਟਣਾ ਹੀ ਸ਼ਾਂਤੀ ਹੈ ਆਹ ਗੁਣੋ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਦਾ ਬੇਅੰਤ ਐ ਹੁਣ ਕਿਹੜਾ ਕਿਹੜਾ ਦਸੀਏ ਬੇਅੰਤ ਕਾਹਕੇ ਗੁਣਾ ਦੋਤਾ ਗੁਣ ਗਾਇੰ ਤੋਂ ਤਾਂ ਪਿੱਛੇ हट ਗਏ ਗੁਣ ਬੇਅੰਤ ਦੱਸੇ ਹੋਏ ਬਥੇਰੇ ਨੇ ਪਿੱਛੇ ਪਰ ਕੀਮਤ ਨਹੀਂ ਪਾਏ ਅਇਨੇ ਗੁਣਾਂ ਦੀ ਜਿੰਦਗੀ ਇੱਕ ਗੁਣ ਦੇ ਵੀ ਜਿੰਦਗੀ ਆਖਦੇ ਉਹ ਵੱਲ ਗੁਣ ਉਹਦੇ ਗੁਣਾਂ ਮੁੱਲ ਨੇ ਉਹ ਵਪਾਰ ਵਪਾਰ ਵੀ ਉਹਦਾ ਇਸ ਦਾ ਜਾ ਗੁਣਾਂ ਮੁੱਲ ਨੇ ਵਪਾਰ ਕੇ ਮੈਂ ਹੁ ਬੁੱਲੇ ਹੋ ਮੁੱਲ ਦਾ ਵਪਾਰ ਬੁੱਲੇ ਹੋ ਸਕਦਾ ਜੇ ਬੁੱਲੇ ਕਲਾ ਦੇ ਤਾਂ ਮੁੱਲ ਪੈ ਗਿਆ ਜੇ ਵਪਾਰ ਮੁਲ ਬਾਕ ਬੇਟਾ ਮੁਲ ਪੈ ਗਿਆ ਅਮੁੱਲ ਕੋਣਾ ਵਪਾਰ ਵੀ ਮੁਲ ਹੋ ਰਿਹਾ ਨਾ ਹੁੰਦਾ ਜੇ ਵਪਾਰ ਕਰਨਾ ਤਾਂ ਬਿਨਾ ਮੁਲ ਤੇ ਵਪਾਰ ਹੁੰਦਾ ਅਮੁੱਲ ਵਪਾਰੀ ਹੈ ਤੇ ਵਪਾਰੀ ਨੇ ਉਹ ਵੀ ਬਸ ਅਮੁੱਲੇ ਵਨ ਜਦ ਤੇ ਮੁਲ ਦਾ ਵਪਾਰ ਕਰਨ ਵਾਲੇ ਵੀ ਮੁਲੇ ਹੁੰਦੇ ਮਾਇਆ ਤੋਂ ਉੱਤੇ ਉੱਠ ਜਾਂਦੇ ਬੋਲ ਪਰ ਨਾਰਨਾ ਦਾ ਪਰ ਨਾਰਾ ਜੀ ਆਨ ਗੋਵਿਉ ਮੰਨ ਇਸ ਕਰਕੇ ਗੁਣ ਨੇ ਜਿਹੜੇ ਬਹੁਤ ਜਿੱਤੇ ਵੀ ਗੁਣ ਨੇ ਉਹਦਾ ਕੋਈ ਗੁਣ ਦਾ ਇੱਕ ਗੁਣ ਨਹੀਂ ਪਾਇਆ ਜਾ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਨਾਨਕ ਜਿਸ ਭਾਵੇ ਤਿਸ ਲਏ ਬਲਾਇ ਨਾਨਕ ਕਹਿੰਦਾ ਜਿਹਨੂੰ ਉਹ ਚਾਹੁੰਦਾ ਬਲਾਦਾ ਕੋਈ ਜਰੂਰੀ ਨਹੀਂ ਹੈਗਾ ਜਿਹੜਾ ਉਹਦੇ ਪਰੋਂ ਚਲੇ ਨੇਲੇ ਚਲਾ ਜਾਵੇ ਸਾਰਿਆਂ ਨੂੰ ਬੁਲਾ ਲਵੇ ਤੇ ਸੈਟੀਸਫਾਈ ਹੁੰਦਾ ਹੈ ਕਿ ਬਰੋਤੀ ਜਾਂਦਾ ਸੱਚਖੰਡ ਦਾ ਬਰੋਤੀ ਥਲੇ ਇਹ ਜਿਹੜਾ ਵੀ ਆਦਮੀ ਮੰਨ ਕੇ ਜਾਂਦਾ ਹੈ ਐਨਾ ਜੇ ਇੱਥੇ ਰਹਿ ਗਏ ਜੋ ਵੀ ਆਦਮੀ ਪਾਕਿਸਤਾਨ ਦੇ ਯੇਸ਼ ਰਹਿ ਹੈ ਸਾਲ 4 ਸਾਲ 10 ਸਾਲ ਆਪਣਾ ਫੌਜੀ ਵੀ ਉਹਦੇ ਛੇਤੀ ਛੇਤੀ ਇਸ ਵਾਰ ਕਰ ਸਕੀ ਇਹ ਤੇੀ ਸਰਕਾਰ ਪਤਾ ਨਹੀਂ ਉਹਨਾਂ ਨਾਲ ਕੀ ਉਹਨੇ ਸਮਝੌਤਾ ਕਰ ਲਈ ਹੋਵੇ ਉਹਦੇ ਤੇ ਸਰਕਾਰਾਂ ਨੇ ਰੱਖ ਚਾਹੇ ਕਿੰਨਾ ਇਮਾਨਦਾਰ ਫਿਰ ਆਪਣੇ ਕੋਲ ਰੱਖ ਕੇ ਉਹਦੇ ਤੇ ਸਾਰਾ ਨਿਗਰਾਨੀ ਰੱਖ ਕੇ ਜੇ ਸਾਬਤ ਹੋਏ ਵੀ ਬਿਲਕੁਲ ਇਮਾਨਦਾਰ ਹੈ ਬੰਦਾ ਸਾਡਾ ਹੀ ਵਫਾਦਾਰ ਹੈ ਫੁਲਕਾ ਦਾ ਹੀ ਵਫਾਦਾਰ ਹੈ ਬਿਲਕੁਲ ਉਹਨਾਂ ਦੇ ਲਾੜੀ ਫਿਰ ਉਹਨੂੰ ਸ਼ਹਿਰੀ ਮੰਨਿਆ ਜਾਂਦਾ ਇੱਕ ਨੰਬਰ ਜਿਹੜਾ दूई ਸੰਤ ਜਿਹੜਾ ਹੋਵੇ ਤੇ ਛੇਤੀ ਦੁਆ ਦੀ ਕਿਤਾਬ ਹੋਵੇ ਇਸ ਕਰਕੇ ਆ ਜਿਹੜੀ ਸ਼ਰਤ ਹੈ ਜਿਸ ਪਾਵੇ ਉਸ ਨੇ ਮਿਲਾਈ ਅਸੀਂ ਮਿਲਣਾ ਚਾਹੁੰਦੇ ਵੀ ਹੋਈਏ ਪਰ ਜਦ ਨਾਲ ਉਹ ਨਾ ਚਾਹੇ ਹੁਣ ਸਰਕਾਰ ਸਾਡਾ ਛਾਂਡਾ ਲਈ ਸਾਡੂ ਵੇਚਨੇ ਵਾਸਦੇ ਸਾਡੇ ਖਾਤਰ ਕੀ ਤੇਵ ਲੋਗ ਕੇ ਇਤਜ਼ਾਰ ਕਰੋ ਸਰਕਾਰ ਵਿੱਚ ਤਾਂ ਖਲਦੀ ਦੇ ਸਕਦੇ ਜੋ ਸਰਕਾਰ ਤੇ ਪਾਰਲੀਮੈਂਟ ਕਾਨੂੰਨ ਹੈ ਨਾ ਸੰਸਦ ਉਹਦੇ ਵਿੱਚ ਤੁਹਾਡੀ ਐਂਟਰੀ ਨਹੀਂ ਹੈਗੀ ਸੰਤਦ ਕਰਕੇ ਹੈਗੀ ਸਲਾਹ ਕਰਕੇ ਐਂਟਰੀ ਸਲਾਹ ਨਹੀਂ ਜੀ ਸਲਾਹ ਜੀ ਤੁਹਾਡੀ ਮੰਨੀ ਜਾਂਦਾ ਸਲਾਹ ਜਾਂਦਾ ਤੁਹਾਨੂੰ ਕੋਈ ਰੈਟ ਨਹੀਂ ਵੋਟ ਨਹੀਂ ਤੁਹਾਡੀ ਹੈ ਐਂਟਰੀ ਹੈ ਹਾਲੇ ਤੁਹਾਨੂੰ ਚੈੱਕ ਕਰਾਂ ਜੇ ਤੁਸੀਂ ਖਰੇ ਉਤਰੇ ਤਾਂ ਖਰੇ ਆਉਣੇ ਇੱਥੇ ਪਿੱਛੇ ਬੋੜਦਾ ਮੈਂ ਜਿਹੜਾ ਬਾਰਡਰ ਤੇ ਹੀ ਰਖਿਆ ਹੋਇਆ ਜਿਹੜਾ ਹਵਾਈ ਅੱਡਾ ਨਾ ਉਹਦੇ ਵਿੱਚ ਹੀ ਜਨ ਹੈ ਬਾਹਰ ਨਹੀਂ ਕੱਢਦੇ ਕੈਬਿਨਟ ਜੀ ਨਾ ਥੋੜਾ ਜਿਹਾ ਨਾਲ ਜਲ ਭਾਵੇਂ ਦਾ ਲੈ ਮਲਾਇਆ ਉਹ ਕਰਨੇ ਸ਼ਾਮਲ ਹੋਵੇਗਾ ਥੋੜਾ ਫਿਰ ਉੱਥੋਂ ਬਾਹਰ ਚਾਉਣਾ ਹੋਵੇਗਾ ਬਣਾਣ ਸ਼ਾਮਲ ਹਵਾਈ ਦਾ ਪਾਸਪੋਰਟ ਜਾ ਕੋਨਣਾ ਉਹਦੇ ਸਟੇਟਸ ਵਿੱਚ ਪਾਸਪੋਰਟ ਆਜੋ ਤਾਂ ਅੱਡੇ ਤੇ ਹਵਾਈ ਅੱਡੇ ਤੇ ਜਾ ਕੇ ਉਹਦੇ ਜੋ ਉਹਨੇ ਚੱਕਾ ਵੀ ਕੋਈ ਚੈੱਕ ਕਰਦੇ ਨੇ ਉਹਦੇ ਜਾਂ ਦੇਖਾਂਗੇ ਤਾਂ ਫਿਰ ਉਹ ਕਹਣ ਮੈਂ ਇਹ ਜੋ ਪੈਨਿੰਗ ਦੇ ਵਿੱਚ ਰੱਖਿਆ ਹੋਇਆ ਉਹ ਦਾ ਹਾਂਜੀ